ਆਪ ਮਦ ਅੰਮ੍ਰਿਤ ਤਸਕੀ ਧਾਰ ਸਤ ਸੰਗਤ ਸوں ਮਿਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਵਿਕਾਰ ਆਪ ਮਦ ਕਾਇਆ ਦੇ ਵਿੱਚ ਜਿਹੜਾ ਲਹਣ ਕਾਇਆ ਵਿੱਚ ਲਹਣ ਦੇ ਲਹਣ ਦੇ ਵਿੱਚ ਸ਼ਰਾਬ ਹੁੰਦੀ ਹੈ ਦਾ ਤੱਤ ਸ਼ਰਾਬ ਹੁੰਦੀ ਹੈ ਕਾਇਆ ਦਾ ਸਪੇਸੇ ਹੈ ਕਾਇਆ ਦਾ ਮਾਇਆ ਇਹ ਸਪੇਸੇ ਹੈ ਅਕਸਰ ਸਪੇਸ ਵੀ ਤਾਂ ਆਕਾਸ਼ ਵੀ ਤਾਂ ਮਾਇਆ ਹੀ ਹੈ ਕਾਇਆ ਤੇ ਜੋ ਵੀ ਅਸੀਂ ਪਾਇਆ ਲਾਹਣ ਮਿਕਸਚਰ ਹੈ ਪੂਰਾ ਇਹ ਤੱਪਦਾ ਸਾਰ ਹੈ ਉਹ ਜਿਹੜਾ ਚੇਤਨ ਨੂੰ ਕਾਇਆ ਦੇਣਾ ਚੇਤਨ ਕਰਕੇ ਹੀ ਕਾਇਆ ਹੈ ਚੇਤਨ ਗੈਰ ਕਾਇਆ ਖਤਮ ਚੇਤਨ ਦੀ ਸ਼ਕਤੀ ਨਾਲ ਜਿਵੇਂ ਹਵਾ ਭਰਦੇ ਹੁਣ ਜਾਂਦਾ ਟੈਰ ਬੋਲ ਜਾਂਦਾ ਹਵਾ ਲੱਗ ਜਾਂਦੀ ਹੈ ਟੈਰ ਜਿਵੇਂ ਉੱਠ ਜਾਂਦੀ ਹਵਾ ਦੀ وجہ ਆ ਨਾ ਹਵਾ ਦੀ وجہ ਨਾਲ ਜਿੱਡੀ ਸ਼ਕਤੀਸ਼ਾਲੀ ਲਾਈਟ ਹੁੰਦੀ ਹੈ ਉਹ ਨਾਲ ਚੱਲੂ ਦੂਰ ਤੱਕ ਦਾਇਰਾ ਹੋ ਜਾਂਦਾ ਜਿੰਨ ਲੜ ਤੁ ਜੋਰ ਹੁੰਦੀ ਜਾਂਦੀ ਆ ਮੇਰਾ ਉਹਨੂੰ ਕਲੋਸ ਕਰਦਾ ਚਲਾ ਜਾਂਦਾ ਰੋਜ਼ ਘੰਟਾ ਚਲਾ ਜਾਂਦਾ ਤੇਰਾ ਉਹ ਇਹਦਾ ਮਤਲਬ ਉਧਰ ਹੋ ਗਿਆ ਹੰਤਾ ਦਾ ਪ੍ਰੈਸ਼ਰ ਇਧਰ ਹੋ ਗਿਆ ਪ੍ਰੈਸ਼ਰ ਅੰਦਰ ਪ੍ਰੈਸ਼ਰ ਆ ਤਾਂ ਫੁਲ ਫੁਲਾ ਬਾਹਰ ਨੂੰ ਫੈਲਦਾ ਹੈ ਜੇ ਅੰਦਰ ਪ੍ਰੈਸ਼ਰ ਘਟਦਾ ਬਾਹਰ ਦਾ ਪ੍ਰੈਸ਼ਰ ਐਟਮੋਸਫੀਅਰ ਦਾ ਪ੍ਰੈਸ਼ਰ ਐਟਮੋਸਫੀਅਰ ਪ੍ਰੈਸ਼ਰ ਉਹ ਪੰਜ ਜਾਂਦਾ ਅੰਦਰ ਰੁਸ ਪੜ ਜਾਂਦਾ ਕਾਇਆ ਲਹਣ ਆਪ ਮਦ ਜਿਹੜਾ ਜੇ ਆਪ ਨਾ ਹੋਵੇ ਤਾਂ ਤਤ ਨਹੀਂ ਤਤ ਤੇ ਨਾ ਜੇ ਤਤ ਨਾ ਹੋਵੇ ਲਹਣ ਦੇ ਵਿੱਚ ਤਾਂ ਲਹਣ ਨਹੀਂ ਕਹਿ ਸਕਦੇ ਸਰਬਤ ਨੂੰ ਲਹਣ ਨਹੀਂ ਕਹਿ ਸਕਦੇ ਸਰਬਤ ਨੂੰ ਸ਼ਰਵਤ ਜੇ ਨਾ ਜਰ ਸ਼ਰਵਤਾ ਨੂੰ ਜਲਣ ਜੀ ਨੂੰ ਜਲਣ ਜੀ ਜਿੰਨਾ ਜਰ ਸ਼ਰਵਤ ਨੇ ਖੱਟਾ ਨਹੀਂ ਬਣਨਾ ਖੱਟਾ ਬਣ ਕੇ ਫਿਰ ਉਹ ਚ ਪ੍ਰਕਿਰਿਆ ਨਹੀਂ ਚੱਲਣੀ ਲਾਹਣੀ ਜੀ ਹੂੰ ਗਾਣ ਗੁਣੋਂ ਗੁਣਾ ਜੇ ਤਬਦੀਲ ਹੋ ਜਾਂਦੇ ਨੇ ਗੁਣ ਗਲ ਜਾਂਦੇ ਨੇ ਪੱਲਾ ਹਣ ਤਿਆਰ ਹੋ ਹੋਰ ਕਿਸਮ ਦਾ ਲਾਹਣ ਦੋ ਤਰ੍ਹਾਂ ਦਾ ਲਾਹਣ ਹੈ ਇਕ ਲਾਣ ਆ ਜਾਣਾ ਗੁੱਲ ਸਰਜੀਤ ਹੁੰਦੇ ਨੇ ਤਾਵਣ ਨੇ ਇਹ ਜਿਹੜਾ ਲਾਣ ਹੋਜੀ ਚਿਕਣੇ ਵਿੱਚ ਦੀ ਹਾਨੀ ਹੁੰਦੀ ਹੈ ਇੱਕ ਚੀਜ਼ ਦਾ ਲਾਹ ਹੁੰਦਾ ਲਾਹਣ ਲਾਹ ਔਰ ਹਾਨੀ ਤੋਂ ਬਣਿਆ ਹੋਇਆ ਲਾਹਣ ਲਾਹ ਔਰ ਆਣੀ ਆ ਲਾਹ ਹਾਨੀ ਤੋਂ ਹਾਨੀ ਔਰ ਲਾਹ ਤੋਂ ਹਮ ਇੱਕ ਚੀਜ਼ ਮਰੂਗੀ ਦੂਜੀ ਚੀਜ਼ ਪੈਦਾ ਹੋਊਗੀ ਇੱਕੀ ਦਾ ਨਾਂ ਸੁ ਦੂ ਹੀ ਪੈਦਾ ਹੋਊਗੀ ਗੁਣ ਵਰਨ ਕੇ ਉਗੜ ਪੈਦਾ ਉਹਨਾਂ ਦੇ ਉਗੜ ਵਰਨ ਕੇ ਉਗੜ ਪੈਦਾ ਹੋਊਗਾ ਹੰਨੀ ਲਾਵੇ ਲਾਣ ਉਹ ਕੀ ਹਣ ਇੱਕ ਚੀਜ਼ ਹੰਨੀ ਗਈ ਦੂਜੀ ਚੀਜ਼ ਬੈਦ ਮਿੱਠਾ ਵਰ ਗਿਆ ਖੱਟਾ ਪੈਦਾ ਹੋ ਗਿਆ ਮਿਠਾਸ ਮਰ ਗਿਆ ਖੱਟਾ ਬੈਠਾ ਹੋ ਗਿਆ ਪਾਣੀ ਜਰਨਾ ਖੱਟਾ ਹੁੰਦਾ ਹੁੰਦਾ ਨਾ ਖੱਟਾ ਅਪ ਘਟਾ ਹੁੰਦਾ ਘਟੇ ਤੇ ਕਿੱਥਾ ਹੁੰਦਾ ਪਾਦੌਂ ਨਾ ਜੁਬ ਕੇ ਦੇ ਲੋ ਘਟਾ ਹੁੰਦਾ ਅਸੂਜਾ ਕੇ ਬਿਠਾ ਹੋ ਜਾਂਦਾ ਰਸਤਾ ਨਹੀਂ ਬਦਲਦਾ ਕੱਢ ਕੇ ਕੱਢ ਕੇ ਹੋਰ ਪਾਤਾ ਉਹ ਉਹੀ ਰਸ ਬਦਲਿਆ ਉਹੀ ਰਸ ਬਦਲਿਆ ਹੋਈ ਲਹੜ ਖਿਆ ਜਿਆਦਾ ਸਮਝ ਆ ਗਈ ਹਾਂਜੀ ਦੇ ਅਰਥ ਕੀਤੇ ਜਿਆਦਾ ਹਾਂ ਲਹੜ ਦੇ ਅਰਥ ਆਖਰ ਕੀ ਗੱਲ ਤੇ ਸ਼ਬਦ ਘੜਿਆ ਹੀ ਹੈ ਹਾਂਜੀ ਲਾਹਣ ਕਿਸੇ ਕਦੋਂ ਬਣਾਉਂਦੇ ਕਸ ਪਾਉਂਦੇ ਨੇ ਕਾਹਤਾ ਨਹੀਂ ਖੱਟੇ ਖੱਟੇ ਦੇ ਬਦਲੇ ਬਦਲ ਜਾਂਦਾ ਇਹ ਬਦਲਦਾ ਇਹ ਬਦਲਦਾ ਟੈਂਪਰੇਚਰ ਨਾਲ ਰੂੜੀ ਜਿਦਾ ਆਹ ਹਰੂ ਨਹੀਂ ਤਾਂ ਕੋਈ ਬਾਤ ਜਬ ਨਹੀਂ ਬਨੇ ਆਹ ਉੱਤੇ ਵੀ ਥੋੜਾ ਫਰਕ ਹੁਸੇ ਦਾ ਬੰਦ ਕੋਈ ਖਰਾਬ ਹੋ ਜਾਂਦਾ ਜਿਆਦਾ ਟੈਂਪਰੇਚਰ ਤੇ ਵੀ ਖਰਾਬ ਹੋ ਜਾਂਦਾ ਟੈਂਪਰੇਚਰ ਉੱਤੇ ਮੇਨਟੇਨ ਰੱਖਦੇ ਨੇ ਜਿਹੜੇ ਨੇ ਹੋਏ ਨੇ ਆ ਨੇ ਪੰਪ ਲੱਗੇ ਨੇ ਪੰਪੇ ਦੀ ਛੱਤ ਪਈ ਹੋਈ ਪਾਣੀ ਦੀ ਟੈਂਪਰੇਚਰ ਠੀਕ ਰੱਖਦੇ ਨੇ ਸਿਆਲਾ ਚ ਪਾਣੀ ਗਰਮ ਹੋਣਾ ਚਾਹੀਦਾ ਤੇ ਗਰਮੇਜ ਪਾਣੀ ਤਾਜ਼ਾ ਬਣਾਉਂਦੇ ਬਸ ਜੇ ਟੈਂਪਰੇਚਰ ਠੀਕ ਆ ਉਹਦੀ ਫਿਰ ਠੀਕ ਤੇ ਟੈਂਪਰੇਚਰ ਦੇ ਅੱਤੇ ਤੁਸੀਂ ਇਹ ਦਹੀਂ ਹੈ ਨਹੀਂ ਜਾਉਂਦਾ ਟੈਂਪਰੇਚਰ ਦੇ ਹਿਸਾਬ ਨਾਲ ਇਹ ਕੀ ਪਾਉਂਦੇ ਇਹ ਈਸਟ ਇੱਕ ਚੀਜ਼ ਹੁੰਦੀ ਹੈ ਈਸਟ ਪਾਉਂਦੇ ਈਸਟ ਕਿਉਂ ਲਈ ਇਹਦਾ ਆਟਾ ਫੁੱਲਣ ਕਰਾਂਦੇ ਉਹਦੇ ਚੋ ਉੱਲੀ ਪੈਦਾ ਹੋ ਜਾਂਦੀ ਉੱਤੇ ਦੇਖੀਓ ਉੱਤੇ ਆ ਜਾਂਦਾ ਉਹ ਰੋਟੀਆਂ ਦੇ ਪੈਦਾ ਹੋ ਜਾਂਦੀ ਛਿੱਟਾ ਛਿੱਟਾ ਉਹ ਪੈਦਾ ਕਰਦੇ ਨੇ ਡਿਸਟ੍ਰੀਡ ইস্ট ਪੈਦਾ ਹੁੰਦਾ ਪਾਉਂਦੇ ਨੇ ਉਹ ਖਮੀਰ ਉਹ ਪੈਦਾ ਹੁੰਦਾ ਕਈ ਕਈ ਦੇ ਵਿੱਚ ਕਿਸੇ ਚੀਜ਼ ਜੇ ਰੈਡੀमेड ਖਮੀਰ ਪਾ ਲਓ ਜਦ ਇਹ ਉਹ ਜਲਦੀ ਤਿਆਰ ਕਰ ਜਲਦੀ ਤਿਆਰ ਐ ਜੀ ਜੀ ਜੀ ਉਹ ਪਟੂ ਰੇ ਜਾਂਦਾ ਲਾਹਣ ਮਦ ਕਾਇਆ ਲਾਹਣ ਕਾਇਆ ਦੇ ਚਲਾ ਹਟੋਟਾ ਹੁਣ ਜਿਆਦਾ ਨੇੜੇ ਆ ਗਏ ਸਰੀਰ ਤੇ ਲਾਹਟ ਟੋਟਾ ਅਸਲ ਤੇ ਕਾਇਆ ਹੀ ਸਰੀਰ ਹੈ ਬਾਹਲਾ ਸਰੀਰ ਨਹੀਂ ਹੈ ਸਰੀਰ ਇਹ ਅੰਦਰਲਾ ਸਰੀਰ ਪਹਿਲਾਂ ਬਣਦਾ ਹੈ ਸਰੀਰ ਬਾਅਦ ਵਿੱਚ ਬਣਦਾ ਪਰ ਪੈਦਾ ਹੁੰਦਾ ਕਾਇਆ ਪੈਦਾ ਹੋ ਕੇ ਪਰ ਪਹਿਲਾ ਅੰਦਰ ਹੁੰਦਾ ਪਰ ਜਦ ਬਾਹਰ ਆਉਂਦਾ ਨਾ ਪੈਦਾ ਹੋ ਕੇ ਬਾਹਰ ਉਦੋਂ ਹੀ ਹੋਏ ਰਾਮ ਦੇ ਗਰਭ ਤੋਂ ਬਾਹਰ ਹੋਏ ਉਦੋਂ ਨਾਮ ਆਨੇ ਤਾਂ ਮੰਨ ਹੈ ਐਸੇ ਗ੍ਰਹਿ ਹਮ ਬਹੁਤ ਕੰਡੂ ਬਸਾਇ ਜਦ ਰਾਮ ਦੇ ਗਰਭ ਚੋਂ ਬਾਹਰ ਨਿਕਲਦਾ ਤਾਂ ਗ੍ਰਹਿ ਬਸਾਉਂਦਾ ਵਰਨਾ ਨਹੀਂ ਬਸਾ ਸਕਦਾ ਸੱਪ ਸੱਪ ਦੇ ਵਿੱਚੋਂ ਨਿਕਲਦਾ ਹੈ ਦੋ ਬਣਦੇ ਨੇ ਤਾਂ ਇੱਕ ਸਿੰਘ ਦੋ ਸੀ ਤਲਵਾਰ ਬਿਆਨ ਚੋਂ ਵਹਾਇਆ ਕੀ ਦੋ ਹੋਗੇ ਦੋ ਘਾਵੇਂ ਇੱਕ ਘਾਵੇਂ ਚਲੋ ਇਹ ਕਹ ਰਹੇ ਨੇ ਹੂੰ ਮਿਆਨ ਅਟ ਕਰਤਾ ਤਰ ਵਾਰ ਅਟ ਕਰਤੀ ਦੋ ਹੋ ਗਏ ਕਹਣ ਸੋਡੂ ਦੋਨੇ ਕਹਣ ਸੋਡੂ ਦੋਨੇ ਨਗ ਦੋ ਪ੍ਰਤੀਤ ਹੁੰਦੇ ਪਹਿਲਾਂ ਵੀ ਕਿਸੇ ਜਦ ਵਿੱਚ ਪਰ ਫਿਰ ਵੀ ਕੋਈ ਜਿੰਨਾ ਜਰਵਾਰ ਹੋਣੇ ਚ ਦੋਨੇ ਐਵੇਂ ਬਾਰੇ ਜਿੰਨਾ ਜਰਵਾਰ ਹੋਣੇ ਚ ਦੋਨੇ ਹਾਂ ਦੋਵਾਂ ਦੇ ਨੌ ਵੀ ਵਖਰੇ ਵਖਰੇ ਹਾਂਜੀ ਉਹਨਾਂ ਜਿਹੜੇ ਤਾਂ ਵਖਰੇ ਵਖਰੇ ਨੇ ਜਿੰਨਾ ਚਿਰ ਅੱਡ ਅੱਡ ਨੇ ਅੱਡ ਅੱਡ ਫੇਰ ਕੀ ਆ ਫੇਰ ਤਰਵਾ ਰਹੇ ਲੋਕ ਇੱਕ ਕਰੇ ਨੌ ਵੀ ਖਤਮ ਹੋ ਗਿਆ ਗਿਆਨ ਵੀ ਫੇਰ ਇਹ ਵੀ ਕਿੱਦਾਂ ਜਾਂਦਾ ਮਨ ਵਿੱਚ ਮਨ ਵਿੱਚ ਹੈ ਬਾਹਰ ਹੈ ਗਿਆਨ ਖਤਮ ਹੋ ਗਿਆ ਜੋ ਆਪ ਆਪ ਲਗਵਾ ਰਹੇ ਆਪ ਮਤ ਆਪ ਕੀ ਆ ਰਹੇ ਨਾ ਆਪ ਜੋ ਵਸ ਤਤ ਤ ਜੀਜੇ ਬਣਦੇ ਉਹਦੇ ਵਸ ਦੇਖੋ ਇੱਥੇ ਉਲਟੀ ਗੱਲ ਹੈ ਪਹਿਲਾਂ ਉਹਨਾਂ ਦੀ ਬਾਹਰ ਹੁੰਦੀ ਤੇ ਪਹਿਲਾਂ ਨਾਲ ਕਾਲੇ ਦਾ ਨੂ ਅਸਲ じゃ ਕਾਹੇ ਦਾ ਨਾਮ ਯਾਦ ਮੈਂ ਚੇਤਰਾ ਬਾਹਰ ਹੁੰਦੀ ਹੈ ਚਾਨਣ ਕਾਹਤੇ ਹੀ ਬੰਦਾ ਜਾ ਕੇ ਟਾਰਚੇ ਚਾਨਣ ਬਾਹਰ ਆ ਗਿਆ ਕਿ ਚਾਨਣ ਬਾਹਰ ਨਹੀਂ ਆ ਗਿਆ ਬਸ ਆਇਆ ਨਾ ਵਿੱਚੋਂ ਹੀ ਉਹਦੇ ਕੁਝ ਆਇਆ ਵੀ ਬਾਹਰ ਆਇਆ ਵੀ ਕੁਝ ਨਹੀਂ ਟਾਰਚ ਦਾ ਬਜਲ ਹੋਣਾ ਹੀ ਹੈ ਭਾਈ ਤਾਂ ਕੋਈ ਨਹੀਂ ਪਿਆ ਅਬਹਰ ਆ ਕੇ ਨਿਕਲਣ ਦੇ ਦੀਦਾ ਬਾਅਦ ਭਜਨ ਤੋਂ ਲੋੜ ਨਹੀਂ ਆਡੀਓ ਜਾਂ ਡਾਰਜ ਕੋਈ ਫਰਕ ਪ ਨਹੀਂ ਹਾਂ ਸੈੱਲ ਦੇ ਉੱਤੇ ਫਰਕ ਪੈਂਦੀ ਉਹਦੀ ਉਹਦੀ ਤਾਕਤ ਦੇ ਉੱਤੇ ਫਰਕ ਪੈਂਦਾ ਸੈੱਲ ਦੀ ਸ਼ਕਤੀ ਤੇ ਫਰਕ ਪੈਂਦਾ ਇਹਵੇਂ ਜਿਹੜਾ ਅੰਦਰ ਲੱਲ ਦੀ ਸ਼ਕਤੀ ਦੀ ਵਾਇਰ ਜਰੂਰ ਹੋਗੀ ਪਰ ਉਹ ਕੋਈ ਨਹੀਂ ਫਰਕ ਪੈਂਦਾ ਆਈਵਰ ਮਨ ਇਕੱਠਾ ਇਕਮਲ ਹੋ ਜਿਤ ਹੋ ਕੇ ਸ਼ਕਤੀਵੰਤੀ ਇਹਦੀ ਸ਼ਕਤੀਵੰਤੀ ਇਹ ਸ਼ਕਤੀ ਲਈ ਵੈੜਵੀ ਹੁੰਦੀ ਹੈ ਸ਼ਕਤੀਵੰਤੀ ਵੀ ਭਗਤਾਂ ਤਾਣ ਤੇਰਾ ਤੇਰਾ ਪੱਕਾ ਨੂੰ ਤੇਰੇ ਸ਼ਕਤੀ ਦੀ ਲੋੜ ਹੈ ਤੇਰੇ ਵਾਲੇ ਤਾਣ ਦੀ ਲੋੜ ਹੈ ਇਹੋ ਵਖਰਾ ਕੀਤਾ ਹੈ ਜਿੰਨਾ ਜਰਮਾਨਾ ਵਾਲੀ ਸ਼ਕਤੀ ਨਹੀਂ ਜੁੜਦੀ ਅੰਦਰ ਵਾਲੇ ਦੇ ਨਾਲ ਚਿੱਤ ਦੇ ਨਾਲ ਉਹਨਾਂ ਜਰ ਭਰਮ ਦਾ ਡਾ ਨਹੀਂ ਹੁੰਦਾ ਕਰਾਏ ਦੀ ਗੱਲ। ਇਹ ਉਚਲ ਕੇ ਕਿਰਾਇਆ ਕਰਨ ਵਾਸਤੇ ਸ਼ਕਤੀ ਟੋਟਰ ਚਾਹੀਦੀ। ਦੋਲੇ ਦੀ ਸ਼ਕਤੀ ਇੱਕ ਕਰਨ ਵਾਸਤੇ। ਦੋਹਾਂ ਨੂੰ ਇੱਕ ਕਰਨ ਵਾਸਤੇ ਇਹਨੂੰ ਗਿਲਦੀ ਲੋੜ। ਦੋ ਅੰਦਰ ਅੰਦਰੇ ਦੋ ਨੇ ਨਾ। ਤੰਦਰੇ ਦੋ ਨੇ। दो 2000 2 ਕਿਉਂ ਹੋ ਗਏ ਪਰਮ ਕਰਕੇ ਉਹ ਜਿਹੜੇ ਪਰਮ ਕਰਕੇ ਮਨ ਪਾਟ ਜਾਂਦਾ ਕਿਸੇ ਨਾਲ ਕਿਸੇ ਨਾਲ ਇੱਥੇ ਇਹ ਹੀ ਮਿਸਾਲ ਦੇ ਸਕਦੇ ਪਰ ਕੋਈ ਗੱਲ ਨਹੀਂ ਹੁੰਦੀ ਸ਼ੱਕਾ ਪੈ ਜਾਂਦੀ ਮਨ ਪਰਮਾਨੁਕਾ ਨੇ ਅਸਰ ਚ ਹੋਵੇ ਨਾ 100% ਉਬਰ ਜੇ ਐਸਾ ਜਾਣੀਏ ਹੋਏ ਨਾ ਤੈਸੇ ਸੋ ਜੇ ਐਸਾ ਆਪਾਂ ਮੰਨ ਲੀਏ ਵੀ ਇਹ ਹੈਗਾ ਉਹ ਹੋਵੇ ਹੁਣ ਪਰਮਾਨੁਕਾ ਜਿਵੇਂ ਬਹੁਤ ਸਾਰੇਨ ਸ਼ੱਕ ਪੈ ਜਾਂਦੀ ਏ ਇਸੇ ਤੇ ਡਾਰੋਗੜ ਵੀ ਕਰਵਾ ਦਿੰਦੇ ਨੇ ਇਹ ਮੰਨ ਕੇ ਕਰਵਾ ਦਿੰਦੇ ਵੀ ਇਹ ਮਨਦਰ ਬਾਜਦੇ ਨੇ ਵੀ ਆ ਰਿਹਾ ਸਦਲਤ ਹੋ ਗਿਆ ਬੰਦ ਹੋ ਰਹੀ ਸੀ ਇਹ ਜੇ ਪਛਤਾਵਾ ਮਨ ਨੂੰ ਤਾਂ ਜੋ ਮਨ ਨੇ ਸ਼ੰਕਾ ਕੀਤੀ ਹੈ ਐਕਚੁਅਲੀ ਗਲਤ ਸੀ ਜਦੋਂ ਨੂੰ ਇਹ ਪਤਾ ਲੱਗਦਾ ਨਹੀਂ ਗਲਤ ਸੀ ਫਿਰ ਪਛਤਾਵਾ ਸ਼ੰਕਾ ਪੈਦਾ ਹੁੰਦੀ ਹੈ ਕੋਰੋਦਲੀ ਤੋਂ ਜਦੋਂ ਕਾਮ ਕਲਮਨ ਆਪਣੇ ਆਪ ਨੂੰ ਆਪਣਾ ਸਮਝ ਲੈਂਦਾ ਸ਼ੰਕਾ ਪੈਦਾ ਹੋਣੀ ਜ਼ਰੂਰੀ ਬੇਰੀ ਵੱਧ ਥੋੜੀ ਨਰਮ ਦਾ ਹੀ ਮਤਲਬ ਮਰ ਕਦੇ ਵੀ ਨਾ ਖਾਏ ਮੇਰੀ ਮਾਂ ਨੂੰ ਇਹਨੇ ਬਹੁਤ ਐਡਮਿਟ ਕਰਦਾ ਹੈ ਮੇਰੀ ਮਾਂ ਥੋੜੀ ਨਰਮ ਤੇ ਦੇਖ ਲੈੰਦਰ ਤੇ ਦੇਖ ਲੈੰਦਰ ਜੇ ਬੱਚੀ ਪੱਥਰ ਤਾਂ ਪੱਥਰ ਹੈ ਕਹਾਂ ਤਾਂ ਬੱਚੀ ਟੱਕਰ ਵਾਲੂਗੀ ਜਾਂ ਨਹੀਂ ਸਕਦੀ ਕਹਦੇ ਨੀ ਬੱਚੀ ਪੱਥਰ ਚੱਟ तिरकड़ा हम बतासा सी ओदे मुंह च फुट जांदा भारीया वे मुंह च इसका क्या है जब सब है देख लंदा दे, दे, दे, है परख लंदा है हर परख तो परख लंदा है तसल्ली हो जाती है फिर गाना मेरी मत थोड़ी थोड़ी राम तू सब साथ देख के मनदा दे है ना फिर देख के ਸਮਝ ਕੇ ਬੰਨੂਗਾ ਅਸੀਂ ਸ਼ਰਧਾ ਨਾ ਬਣਾਉਦੇ ਨਾ ਉਹਨਾਂ ਨੇ ਦੇਖਿਆ ਜਿਹੜੇ ਇਹਨੂੰ ਬਣਾਉਣ ਵਾਲੇ ਨੇ ਬਣਾਉਣ ਵਾਲੇ ਨੂੰ ਕੀ ਜਾਪੇ ਨਹੀਂ ਦੇਖੇ ਨਹੀਂ ਬੰਦੇ ਸਾਹਿਬ ਉਹਨਾਂ ਦਾ ਖੁਦ ਮਰ ਨਹੀਂ ਬੰਦੇ ਬਣਾਉਂਦੇ ਉਹਨਾਂ ਦੇ ਕੜਾ ਬੰਦੇ ਨੇ ਕੈਦੇ ਇਹ ਬੱਥਾ ਜਾਏਗਾ ਪ੍ਰੋਸੈਸਟਰ ਉਹ ਵੀ ਹੈ ਨਹੀਂ ਭਾਇਆ ਤਾਂ ਗੁਰਨਾਨ ਨੀ ਜੀ ਪਤਰ ਚ ਚਾਹੀ ਠੂਠੇ ਕਾੜੀ ਜਿੰਨੀ ਵਾਰ ਜਿ ਜਿਹੜਾ ਕੋਈ ਕੰਮ ਇੱਕ ਆਦਮੀ ਕਰ ਸਕਦਾ ਹੈ ਉਹ ਰੁਧਵਾ ਵੀ ਕਰ ਸਕਦਾ ਸਭ ਤੋਂ ਪਹਿਲਾਂ ਤਾਂ ਹੰਸੇ ਨੂੰ ਛੱਡ ਗਿਆ ਸੀ ਹਮਾਰੀਆਂ ਤੇ ਹੁਣ ਕੰਨ ਨਹੀਂ ਬੰਦ ਛੱਡਿਆ ਜਿਆਦਾ ਛੱਡਿਆ ਤੇ ਇੱਕ ਵਾਰ ਧੰਨੇ ਬਖਸ਼ ਨੂੰ ਪੱਥਰ ਚੁੱਕ ਲਗਾ ਅੱਜ ਤੱਕ ਦੁਆਏ ਨੂੰ ਕਿਉਂ ਨਹੀਂ ਮਿਲਿਆ ਇਹਦਾ ਉਹਨਾਂ ਤਾਂ ਅੜਿਛ ਉਠਿਆ ਹੋ ਫਿਰ ਤਾਂ ਉਹ ਰਾਜਾ ਪਤਾ ਲੱਗ ਗਿਆ ਲੋਕਾਂ ਨੂੰ ਕਿ ਤੇ ਜ਼ਿਆਦਾ ਨੂੰ ਮਿਲਦਾ ਜਿੰਨੇ ਵੀ ਤਰੀਕੇ ਲੱਗੇ ਹੋਰ ਕਹਾਣੀਆਂ ਦੇ ਕੋਈ ਆਦਮੀ ਵਾਸਤੇ ਦੁਆ ਕਰੇ ਵੀ ਉਹ ਤਰੀਕੇ ਨਾਲ ਉਹਨੂੰ ਮਿਲਿਆ ਜਿਵੇਂ ਨਾਮਦੇਵ ਨੂੰ ਦਰਸ਼ਨ ਵਾਲੇ ਨੇ ਹੱਲੇ ਲੂੜੇ ਤੇ ਰੇਲੋਏ ਨਾਲ ਲੈ ਸਾਰੀਆਂ ਗਾੜੀਆਂ ਪੜ ਕੇ ਦੇਖ ਲੋ ਆਡਾ ਆਡਾ ਉਸੇ ਤਰੀਕੇ ਨਾਲ ਦੂਏ ਨੂੰ ਦਰਸਾਉਂਦੀ ਹੋਏ ਇਹਦਾ ਬਰਦਾ ਝੂਠ ਹੈ ਉਹ ਸ਼ਰਨਾਰਤੀ ਦਵਾਈ ਦੀ ਕਾਰਡ ਸੀਗੀ ਕਿਹਾ ਕੁਝ ਹੋਰ ਸੀ ਸਮਝ ਰਿਹਾ ਕੋਲ ਉਹਨੇ ਗਾਇ ਜਾਣ ਨੂੰ ਕਿਹਾ ਸੀ ਜਿੰਦੀ ਕਰਨ ਨੂੰ ਕਿਹਾ ਸੀ ਉਹਨੇ ਰਹਾ ਗਾਇ ਨੂੰ ਕਹਤਾ ਆ ਗਾਂਜੂ ਦੀ ਕੀਤੀ ਗੁਰਦੱਤ ਤਾਂ ਦੂਈ ਗਾਂਜੂ ਦੀ ਕਰਾਤੀ ਉਹ ਤੀਰ ਦਾ ਵਰੀ ਹੋਈ ਸੀ ਕਰਾਈ ਦਾ ਕਰਾਈ ਫਿਰ ਉਹਨੂੰ ਸਜ਼ਾ ਦੇ ਦਿੱਤੀ ਨਾਮਦੇਵ ਨੂੰ ਤਾਂ ਕਦਰ ਨੂੰ ਸਜ਼ਾ ਦਿੱਤੀ ਗੁਰਦੱਤੈ ਨੂੰ ਕਿਉਂ ਸਜ਼ਾ ਦਿੱਤੀ ਗੁਰਦੱਤਾ ਭਗਤ ਨੀਰੇਣੀ ਜਿਹੜਾ ਨਾਮਦੇਵ ਵਿਚਣੀ ਜਾਇਆ ਹੋਇਆ ਹੈ RAMDEW ਨੂੰ ਮੁਰਵਾਨੇ ਪ੍ਰਮਾਣ ਕੀਤਾ ਹੈ ਗੁਰਦੱਤੈ ਨੂੰ ਕਿਹਨੇ ਕਾਜ਼ਨੀ ਗੇਰੀ ਹੋਣ ਤੱਕ ਫਿਕਸ ਉਟਬੇ ਦੇ ਫਿਕਸ ਉਟਬੇ ਕੀ ਅਪਰਾਧ ਸੀ ਕੀ ਅਪਰਾਧ ਸੀ ਉਹ ਗਾਇ ਜੁਦੀ ਜੇ ਨਾਮ ਲੈਵਰੇ ਵੀ ਗਾਇ ਜੁਦੀ ਕੀਤੀ ਹੈ ਕ੍ਰਾਈਮ ਰਕੋ ਸੀ ਉਹਨੂੰ ਕੋਈ ਸਜ਼ਾ ਨਹੀਂ ਮਿਲਦੀ ਤੇ ਤੈਨੂੰ ਕੋਈ ਸਜ਼ਾ ਮਿਲਦੀ ਆ ਕਰਨ ਕੋਈ ਹੈਗੀ ਜੇ ਤੈਨੂੰ ਸਿੱਖਾ ਪਾਈ ਤਾਈ ਵਾਹ ਵਰਗ ਨੂੰ ਉਹ ਜਿਹੜੇ ਬੜੇ ਬੜੇ ਆਪਣੇ ਆਪ ਨੂੰ ਕਹਿੰਦੇ ਸਾਬ ਉਹ ਰੋਧੋ ਨੂੰ ਲੱਗਦਾ ਨਹੀਂ ਉਹ ਲੋਸੀ ਇਹ ਤਾਂ ਸੋਗ ਨਹੀਂ ਜੀਉ ਲੋ ਗੁਰਦੇ ਤੇਨੂੰ ਸਜ਼ਾ ਕਿਉਂ ਤੁਸੀਂ ਮੰਨ ਲਈ ਇਹ ਕਹਾਣੀ ਕਿਵੇਂ ਮੰਨ ਲਈ ਤੁਸੀਂ ਜਾਂ ਨਾਮਦੇਵ ਨੂੰ ਸਜ਼ਾ ਨਹੀਂ ਕੋਈ ਨਾਮਦੇਵ ਨੂੰ ਸਭਖਤ ਖੁਦ ਕੈਸੇ ਪ੍ਰਗਟ ਕਰਦੇ ਨੇ ਜਿਹੜਾ ਕਮ ਗੁਰੂ ਨਹੀਂ ਕਰ ਸਕਦਾ ਗੁਰਦੇ ਤੇਨੇ ਕਰਤਾ ਇੱਕ ਪਾਸੇ ਤੁਸੀਂ ਉਹਨੂੰ ਠੀਕ ਸਮਝੋ ਇੱਕ ਪਾਸੇ ਉਹਨੂੰ ਗਲਤ ਸਮਝੋ ਫਿਰ ਨਾਮਦੇਵ ਵੀ ਬਾਣੀ ਕੋਰ ਬਾਣੀ ਦਿੱਤੀ ਚਲੋ ਸਜ਼ਾ ਨਹੀਂ ਕਿਸਨੇ ਦਿੱਤੀ ਉਸਨੇ ਮੰਨ ਲਿਆ ਸੀ पर गुरु ਘਰ ਤਾਂ ਉਹ ਗਲਤ ਮੰਨਦਾ ਨਾ ਨਾਮ ਨੇ ਵੀ ਬਾਣੀ ਕਿਹਾ ਦੀ ਕਿੱਥੇ ਕਿਸ ਪਾਸੇ ਤੁਹਾਡਾ ਪ੍ਰਚਾਰ ਠੀਕ ਹੈ ਕਿਸ ਪਖਤੋ ਠੀਕ ਹੈ ਕੁਝ ਵੀ ਨਹੀਂ ਸੁੱਤੇ ਬੈਨੇ ਸਾਰੇ ਐਕਚੁਅਲੀ ਸਭ ਹਿੰਦੂ ਸੀ ਇਹ ਜਿਹੜੇ ਸਿੱਖ ਸੀ ਕਬ ਨਹੀਂ ਢੱਡਾ सी ਅਗਲੇ ਨੇ ਹਿੰਦੂ ਸੀ ਝੂਠ ਸੁਣਨਾ ਮੰਨਿਆ ਸੁਰੂ के ਬੱਲ ਉੱਥੇ ਛੱਡ ਕੇ ਚਲੇ ਜਾਂਦੇ ਨੇ ਕਿਹੜੇ ਯਾਦ ਰੱਖਦੇ ਨੇ ਜਿਹੜਾ ਯਾਦ ਰੱਖਦਾ ਏ ਵਿਚਾਰ ਕਰਦਾ ਨਾ ਉਹ ਝੂਠ আর ਸੱਚ याद ਪਰਖ ਕਰਦਾ ਸੁਣਦਾ ਯਾਦ ਰੱਖਦਾ ਬਾਅਦ ਚ ਵਿਚਾਰ ਕਰਦਾ ਨਾ ਉਦੋਂ ਨੋਬਤ ਆਉਂਦੀ ਏ ਝੂਠ ਸੱਚ ਦੀ ਪਰਖ ਦੀ ਹੁਣ ਵਿਚਾਰ ਕੀਤੀ ਹੁਣ ਕਿਵੇਂ ਪਰਖ ਲਿਆ ਪਹਿਲਾਂ ਭਜੂ ਦੇਤਾ ਜਿਉਂ ਜਿਵੇਂ ਜਾਲੇ ਰੋਡ ਜਾਲੀ ਸੀ ਬਹੁਤੋਂ ਤਾਂ ਲੱਗਦਾ ਸੀ ਵੀ ਰੋਡ ਰ ਖੋਲ ਕੇ ਦੇਖੇ ਨਹੀਂ ਗੋੜ ਖੋਲ ਕੇ ਦੇਖ ਵੀ ਲੈਂਦੇ ਜਾਲੀ ਹਾਲ ਤਾਂ ਜਿਹਨੂੰ ਜਾਲੀ ਦਾ ਪਤਾ ਲੱਗਦਾ ਕਿਹੜਾ ਸਾਰਿਆਂ ਨੂੰ ਪਤਾ ਲੱਗਦਾ ਜਾਲੀ ਦਾ ਜਾਲੀ ਦਾ ਕਿਹੜਾ ਸਾਰਿਆਂ ਨੂੰ ਪਤਾ ਲੱਗਦਾ ਜਾਲੀ ਵੀ ਬਿਜਾਰ ਚੱਲਦੇ ਹੀ ਨੇ ਤੁਪ ਮਦ ਜਨਾ ਮਦ ਲੱਭ ਜਾ ਰੇ ਮਦ ਨਸ਼ੇ ਨੂੰ ਕਹਦੇ ਨੇ ਹਾ ਸੱਚ ਆਪ ਆਪ ਸਤ ਸਰੂਪ ਹੈ ਸੱਚ ਦਾ ਨਸ਼ਾ ਤਾਂ ਲੈ ਨਹੀਂ ਸਕਦਾ ਕਦੇ ਝੂਠਾ ਰਛੈ ਲੈ ਲੈ ਸੱਚ ਦਾ ਸੱਚ ਆਪਣੇ ਆਪ ਵੀ ਨਸ਼ਾ ਹੈ ਜਿਹੜਾ ਹੰਕਾਰ ਹੈ ਇਹ ਵੀ ਨਸ਼ਾ ਹੀ ਹੁੰਦਾ ਕੋਈ ਹੰਕਾਰ ਵੀ ਰਛਾ ਦੋਇ ਰਛਾ ਦਾ ਕਿਤਰਾ ਹੋਇਆ ਹੇਰੇ ਰੇਰੇ ਟਕਰਾਊਗਾ ਜੇ ਹੋਊਗਾ ਹਮਮ ਉਹ ਮੈਂ ਆਵੇਂ ਨਾਲ ਤਾਨੀ ਬਰੋਦਾ ਹਮਮ ਹਮੇ ਦਾ ਵੀ ਨਿਸ਼ਾਨ ਸਾਈ ਦੋਲਿਛੇ ਇਹ ਤਾਂ ਜਣੀ ਕਿ ਵੀ ਮਨ ਲੈਵਲ ਦੇ ਹੋ ਤਾਂ ਰਾਜੇ ਨੂੰ ਰਛਾ ਹੈ ਹਮਕਾਰ ਦਾ ਰਾਜਾ ਵਾਹਿਦਾ ਫਾਇਦਾ ਖਿਆਨੈਲਾ ਇੱਜ਼ਤ ਆ ਉਧਰ ਪਖਤਾਨੂ ਨੇ ਹੈ ਸੱਚ ਦਾ ਦੋਏ ਟਕਰਾਗੇ ਉਦੇਵੂ ਤੇ ਕਹਿੰਦੇ ਨੇ ਭਾਤ ਕੋਈ ਹਰਸਮਾਨ ਨਹੀਂ ਰਾਜਾ ਇਹ ਪਉਪਤ ਰਾਜਾ ਹੀ ਨਹੀਂ ਮੰਨਦੇ ਬਹੁਤ ਗੱਲ ਸਭ ਦਿਵਸ ਵਿਚਾਰ ਕੇ ਝੂਠੇ ਕਾਵਾ ਕਰਦੇ ਨੇ ਵੇਸੀ ਰਾਜੇ ਝੂਠੇ ਨੇ ਰਾਜੇ ਹੈ ਜੀ ਵਾਹ ਉਹਨਾਂ ਵਾਸਤੇ ਰਾਜਾ ਗੱਲ ਸੱਚੀ ਹੈ ਵੇਸੇ ਹੰਕਾਰੀ ਨੂੰ ਹੀ ਹੰਕਾਰ ਲੱਗਦਾ ਹੰਕਾਰ ਨਹੀਂ ਹੁੰਦਾ ਸੱਚ ਰਕਾਰੇ ਨੂੰ ਹੰਕਾਰ ਤਾਂ ਬਰੋਚ ਗੱਲ ਕਹੀ ਹੋਈ ਹੰਕਾਰ ਲੱਗਦੀ ਸੱਚ ਦੇ ਮੇਸੇਜ ਤੇਰੀ ਇੱਕ ਸੱਚ ਚ ਮਤਿਆ ਹੋਇਆ ਇੱਕ ਬੱਤ ਨੂੰ ਸੱਚ ਦਾਨ ਗੇ ਜੜਿਆ ਹੋਇਆ ਇਹ ਗੱਲ ਜੋ ਰਤੇ ਰੰਗ ਇੱਕ ਝੂਠ ਦਾ ਰੰਗ ਰੰਗ ਦਾ ਦੋਏਰੇ ਉਕਾ ਨਾ ਬੇਰ ਰੰਗ ਵਰਗਾ ਕੋਈ ਰੰਗ ਨੀ ਉਕਾ ਦੇ ਨਹੀਂ ਇਹ ਰੰਗ ਸੱਚ ਦਾ ਬੇਰ ਨਹੀਂ ਹੈ ਆਵੇ ਬੇਰ ਤਾਂ ਨਹੀਂ ਹੈ ਪਰ ਸੱਚ ਦੇ ਰੰਗ ਵਰਗਾ ਕੋਈ ਰੰਗ ਨਹੀਂ ਇਹ ਨਹੀਂ ਕਹਿੰਦੇ ਬੇਰ ਰੰਗ ਵਰਗਾ ਕੋਈ ਰੰਗ ਨਹੀਂ ਕਹਿੰਦੇ ਸੱਚ ਦੇ ਰੰਗ ਵਰਗਾ ਕੋਈ ਰੰਗ ਨਹੀਂ ਕਾਇਆ ਰੰਗਣ ਜੈਥੀਆ ਕਾਰੇ ਪਾਈਏ ਪਾਉਗਾ ਹੁਣ ਰੰਗਣ ਵਾਲਾ ਜੇ ਰਕੇ ਸਾਹਿਬ ਸਹਿਰ ਦਾ ਰੰਗ ਸਹਿਰ ਰਮਦੇਸ ਦਾ ਰੰਗ ਤਾਂ ਸਹਿਰ ਦਾ ਰੰਗ ਲਾਲੀ ਜਿਹੜੀ ਹੈ ਕਹਿੰਦੇ ਜਿਹੜੀ ਲਾਲੀ ਮੇਰੇ ਲਾਲ ਇਹ ਰੰਗ ਜਿਹੜਾ ਲਾਲ ਰੰਗ ਹੈ ਤਾਂ ਪ੍ਰਵੇਸ਼ ਰੰਗ ਸਾਰਾ ਠੀਕ ਹੈ ਉਹਦੇ ਨਾਲ ਕਿਸੇ ਦਾ ਕੋਈ ਮਕਾਬਲਾ ਨਹੀਂ ਬੈਣਾ ਫਿਰ ਨਾ ਹੋਵੇ ਲੱਗੇ ਧੱਗਾ ਦੂਜੇ ਨੂੰ ਤਾਂ ਵੀ ਲੱਗਦਾ ਬੜਾ ਵੀਰ ਦਾ ਦਾਦਾ ਕਿ ਬਿਲੰਦ ਲੋਗ ਉਹ ਰਗ ਨੂੰ ਫੇਕਾ ਪਾ ਦਿੰਦੇ ਉਹ 사람 ਨੂੰ ਫੇਕਾ ਪਾ ਦਿੰਦੇ ਕਾਊਡ ਉਹ 사람 ਨੂੰ ਫੇਕਾ ਪਾ ਦਿੰਦੇ ਫਕਰ ਉਹ 사람 ਨੂੰ ਨਾਸ਼ ਕਰ ਦਿੰਦੇ ਦੇਖੋ ਆਪ ਵੀ ਫੇਕਾ ਪਾ ਕਾਰ ਰੰਗ ਚੜਦਾ ਆਪਣਾ ਰੰਗ ਜਾਣਦਾ ਨਾ ਲੋਬ ਸਿਰਫ ਫਿੱਕਾ ਕਰਦਾ ਸੱਚ ਉਹ ਵੀ ਫਿੱਕਾ ਹੀ ਕਰਦਾ ਜਾਂ ਫਿੱਕਾ ਜਾਂਦਾ ਫੇਲੇ ਵੀ ਜਾਂਦਾ ਆਪਣਾ ਰੰਗ ਚੜਦਾ ਇਹ ਉਹ ਜਿਹੜੇ ਨਸ਼ੇ ਨਹੀਂ ਇੱਕ ਆਤਮਾ ਲੈਵਲ ਦੇ ਹੋਗੇ ਸੱਚ ਦਾ ਰੰਗ ਇੱਕ ਨਾਮ ਦਾ ਨਾ ਹੋ ਗਿਆ ਹੋ ਗਿਆ ਉਹ ਜਿਹੜਾ ਇੱਕ ਤੀਜੇ ਇੱਕ ਜਿਹੜੇ ਬਾਹਰ ਨਸ਼ਿਆਂ ਦੀ ਗੱਲ ਹੈ ਇਹ ਸਾਰੇ ਸਰੀਰ ਨਾਲ ਸੰਬੰਧਤ ਨੇ ਉਹ ਜਿਹੜੇ ਇਹਦੇ ਨਾਲ ਰਿਲੇਟਡ ਕਰਕੇ ਅਰਥਾਅ ਦਿਤਿਆਗੇ ਉਹਨਾਂ ਦਾ ਕੀ ਮਤਲਬ ਨਸ਼ੇ ਨੇ ਉਹਦਾ ਐਸੇ ਨਸ਼ੇ ਨੇ ਜਿਹੜੇ ਹੰਕਾਰ ਨੂੰ ਮਤਲਬ ਥੋੜਾ ਜਿਹਾ ਐਨਰਜੀ ਦਿੰਦੇ ਕੁਛ ਨਹੀਂ ਸਹੀ ਦੂਜੇ ਵੀ ਨਹੀਂ ਤੁਹ ਕੈਰੋ ਕਾਨੂੰਨ ਨਾਲ ਐਨਰਜੀ ਨਹੀਂ ਦਿੰਦਾ ਫਿਲਟਰ ਨਿਜਾਂ ਨਾਲ ਰੋੜਾ ਵੀ ਨਹੀਂ ਦਿੰਦਾ ਸਿਰਫ ਸ਼ਰਾਬ ਨਾਲ ਨਿਜਾਂ ਨਾਲ ਐਨਰਜੀ ਇਸ ਕਾਰਨ ਕਿ ਕੰਪਿਊਟਰ ਨਹੀਂ ਚੱਲਦਾ ਤਿੰਨਾਂ ਗੁਣਾਂ ਦੇ ਵਿੱਚ ਆਡਾ ਡੇਨ ਦੀ ਸ਼੍ਰੇਣੀ ਵੜੀ ਮੰਨਦੇ ਅਟੜਸ ਲੁੱਕਾ ਸੁਭਾਅ ਹਤੇ ਥੋੜਾ ਬੋਤਾ ਨਾ ਕਰਦੇ। ਉਹ ਕੇ ਬੰਦੇ ਹੁੰਦੇ ਉਹ ਹੀ ਜਿਹੜਾ ਅਸਰ ਪੈਂਦਾ ਸੋਚ ਤੇ ਖੁਦ ਤੇ ਅਸਰ ਪੈਂਦਾ। ਥੋੜਾ ਕੁਝ ਜਿਹੜਾ ਬਲੱਡ ਪ੍ਰੈਸ਼ਰ ਡਾਊਨ ਹੁੰਦਾ ਆਦਮ ਨੂੰ ਬਲੱਡ ਪ੍ਰੈਸ਼ਰ ਅਪ ਹੁੰਦਾ ਆਦਮ ਦਾ ਚੂਨਾ ਘਟਦਾ। ਕੋਲਰੇਡਰ ਘਟਦਾ। ਇਸਰੀਰ ਨਾਲ ਸੰਬੰਧ ਤੇ ਆ ਰਹੇ। ਨਾਲ શરીર ਨਾਲ ਸੰਬੰਧ ਤੇ। ਜਦੋਂ ਬਲੱਡ ਪ੍ਰੈਸ਼ਰ ਡਾਊਨ ਹੋ ਲੋ ਤਾਂ ਪਤਾ ਹੁੰਦਾ। ਇਹਦੇ ਨਾਲ ਬਲੱਡ ਪ੍ਰੈਸ਼ਰ ਹੈ। ਹਾਂ? ਹੈ। ਭਾਵੇਂ ਅਡਰ ਜੇ ਤੁਸੀਂ ਬਤਾਉਂਗੇ ਮਤਲਬ ਮੈਂ ਹੌਸਲਾ ਤਾਂ ਫਿਰ ਹੰਕਾਰ एक ज्ञान, देखो, ਕਾਇਤਾ है, ਕਾਤਰਤਾ दो तरह ਨਾਲ ਇਹ ਕਾਤਰਤਾ ਦੂਰ ਹੁੰਦੀ ਹੈ ਡਾਰਜਿਨੋ ਕਾਤਰ ਇਹਨਾਂ ਪੈ ਇੱਕ ਤਾਂ ਉੱਪਰ ਕੱਟਣ ਵਾਸਤੇ ਬਾਹਰ ਰਸਤੇ ਵਾਲੀ ਹੁੰਦਾ ਤੁਸੀਂ ਜਰਾ ਉਹ ਰਸਤੇ ਵਾਲਾ ਕਾ ਲਿਆ ਸੀ ਟੈਂਪਰੇਰੀ ਹੈ ਜੇ ਉਹ ਪੇਰ ਉਪਸਰਤਾ ਦੁਖਾਈ ਮਹਿਸੂਸ ਨਹੀਂ ਹੁੰਦਾ। ਪਲਾਟ ਆ ਪ੍ਰਾਇਸ ਡਾਊਨ ਹੋਇਆ ਆਪ ਕਰਤਾ। ਉਹ ਥੋੜੀ ਦੇਰ ਵਾਸਤੇ ਕਰਤਾ। ਇッカਮੇ वास्ते ਉਹ ਨਹੀਂ ਰਿਹਾ। ਡਾਊਨ ਹੋ ਗਈ ਉਹ। ਮਨ ਨਾ ਡਰੇ ਤਨ ਕਾਇਕੋ ਡਰ ਆਏ। ਉਹਦੇ ਚੈਗਾ ਗਿਆਨ ਹੈ ਕਿ ਵੱਡਨੀ ਮਨੋ ਹੱਥ ਲੈ ਕਾਤਰਤਾ गांधी का इंजन जेबदार कटया है ऐसा शराब दी कि थोड़ी बड़ी गलती पर वीडियो वो चीज है दी प्यार वाली गरम खड़ गए दी उन वास्ते खड़े वो सारे फौजियों ਨੂੰ ਦਿੰਦੇ ਉਸ ਵੇਲੇ ਰਣਨ ਵਾਸਤੇ ਕੰਕਬਾਉਤ ਨੂੰ ਇਸ ਘਰ ਰੋ ਦਿੰਦਾ ਉਸ ਵੇਲੇ جنگ ਤੇ ਮੌਤ ਐ ਫੇਸ ਕਰਦੀ ਹੋਰ ਤਰਘਾਵ ਪੈਸੇ ਪਾ ਹੱਥੇ ਲੜਦੇ ਨੇ ਲੋਕ ਟੱਬਰ ਪਾਲਣ ਵਾਸਤੇ ਲੜਦੇ ਨੇ ਉਹਨਾਂ ਨੂੰ ਪਤਾ ਹੀ ਨਹੀਂ ਆਇਆ ਦੇ ਨਾਮੇ ਵੀ ਟੱਬਰ ਕੌਣ ਪਾੜੂਗਾ ਕੌਣ ਲੜੂਗਾ ਕੀ ਹੋਊਗਾ ਉਸ ਵਾਸਤੇ ਇਸ ਤੇ ਸਾਰੇ ਕਰਦੇ ਨੇ ਰੁਤੀ ਰਾਜ ਉਹ ਧਾਇਰੇ ਅਗਿਆਨੀ ਆਵਾ ਕਾਰ ਵੀ ਨਹੀਂ ਵਧਾਣਾ ਦੀ ਗੱਲ ਤਾਂ ਇਹਦੇ ਨਾਲ ਉਹ ਤਰੇ ਅੱਜ ਇਰਾਨ ਕਾ ਜਿਹੜੇ ਸ਼ਰਾਬ ਦੁਨੀਆ ਫਿੱਦੀਆਂ ਕੋਈ ਇੱਥੇ ਜਿਹੜਾ ਰੌਲਾ ਪਾਉਂਦਾ ਉਹ ਕਿੰਨੇ ਕਾਰਜ ਹੁੰਦੇ ਹਾਂ ਨਸ਼ੇ ਦੇ ਵਿੱਚ ਫਿਰ ਕੁਝ ਨੰਨਾ ਹੋਇਆ ਜੀ ਬੰਦੇ ਬਹੁਤ ਥੋੜੇ ਲੋਕਾਂ ਨੇ ਸਿਰਫ ਸ਼ਰਾਬ ਤੁਰਬਤ ਤੋਂ ਬਚੜਾ ਸੀ ਉਹਨਾਂ ਨੇ ਰੌਲਾ ਪਾਇਆ ਤਕਾਲੇ ਗਨਪਾਰਤੀ ਜਾਣ ਕੇ ਉਧਰ ਨੂੰ ਧਿਆਨ ਨੂੰ ਜਾਵੇ ਕਿੰਨੇ ਕਾਲੇ ਮਿਰੋਲਾ ਪਾਉਂਦੇ ਤੇ ਸ਼ਰਾਬੀ ਬਹੁਤ ਘਟੀ ਕਿੰਨੇ ਕਾਸ਼ਮੀਰ ਦੇ ਜਿਹੜੇ ਝਗੜਾ ਯੂਰਪ ਦੇ ਵਿੱਚ ਇਹ ਨਾਲ ਨਹੀਂ ਪੀਂਦੇ ਸਾਰੇ ਬੱਚਿਆਂ ਪੀਂਦੇ ਸਾਡੇ ਲੋਕ ਬੋਲ ਦਾਲਦੇ ਸੋ ਕੋ ਕਿਉਂ ਉਹਨਾਂ ਦਾ ਕੱਟ ਸਾਡੇ ਨੂੰ ਕਿੱਥੇ ਕਾਹਦੇ ਕਿਉਂ ਤਦ ਦਾ ਗੱਲ ਆ ਵੇ ਜੇ ਮਤਲਬ ਬੇਸ ਪਹਿਲੇ ਹੀ ਸਹੀ ਹੋਣਾ ਚਾਹੀਦਾ ਤੁਸੀਂ ਬੇਸ ਸਹੀ ਅੰਦਰੋਂ ਇਹਦਾ ਮਤਲਬ ਬਿਲਕੁਲ ਠੀਕ ਹੈ ਤੇਰੀ ਗੱਲ ਮੰਨਦੇ ਇਹਦਾ ਮਤਲਬ ਸਾਡੇ ਧਰਮ ਦਾ ਬੇਸ ਗਲਤ ਹੈ ਪਹਿਲਾਂ ਤੇ ਧਰਮੇ ਉਹ ਧਰਮ ਇਮਾਨਦਾਰਾ ਦਾ ਬਣਾਇਆ ਹੈ ਬੇਸ ਤਾਂ ਗਲਤ ਬਣਾਇਆ ਤੁਹਾਡਾ ਬੇਸ ਹੀ ਗਲਤ ਹੈ ਧਰਮ ਦਾ ਉਹਨਾਂ ਬੇਸ ਚੰਗਾ ਹੈ ਉਹਨਾਂ ਦੇ ਵੀ ਅਸਰ ਪਵੇ। ਉਹ ਇਹ ਤਾਂ ਸਭ ਜਿਹੜੀ ਗੱਲ ਪ੍ਰੈਕਟੀਕਲ ਜਾ ਕੇ ਫੇਲ ਹੋ ਜਾਂਦੀ ਉਹਨੂੰ ਕੋਈ ਨਹੀਂ ਮੰਨਦਾ। ਹਰ ਥਿਊਰੀ ਪ੍ਰੈਕਟੀਕਲ ਜਾ ਕੇ ਪਤਾ ਲੱਗਦਾ ਹੈ ਠੀਕ ਹੈ। ਪ੍ਰੈਕਟੀਕਲ ਜੇ ਥਿਊਰੀ ਬੇਸਿਕਲੀ ਜਿਹੜੇ ਆਦਮੀ ਨੂੰ ਪ੍ਰਚਾਰ ਕਰਦੇ ਨੇ ਉਹਨਾਂ ਦੀ ਜਿੰਨ ਕਿ ਪਤਾ ਕਹੇ ਜੀ ਬਸ ਆਰਾਮ ਜਾਣਦਾ। ਜੀਵਨ ਪਤਾ ਕਹੇ ਜਾਂ ਉਹਦਾ ਨਾ। ਰਾਵੜਾ ਹੀ ਕਹਿੰਦਾ ਸ਼ਰਾਬ ਤੇ ਲੱਗਦਾ ਵੀ ਜੀਵਨ ਕਹੇ ਜੀ। ਕਿਉਂ? ਕਦੇ ਜਿਬਰੋਯਾ ਅਸਰ ਕਰ ਲੈ ਜਿਹੜੀਆਂ ਮੈਂ ਲਖਾਇਆਂ ਦੋਦੋ ਇਸ ਕਰਕੇ ਤਾਰੂ ਦਾ ਪੇਸ ਹੋ ਰਿਹਾ ਆਰਲੈਂਡ ਦੇ ਲੈਸ਼ਾ ਦੇ ਪ੍ਰਚਾਰਟੀ ਹੋਰ ਕੁਝ ਹੋ ਨਹੀਂ ਰੌਲਾ ਪਾਉਂਦੇ ਨੇ ਅਸਲ ਗੱਲ ਨੂੰ ਰੌਲੇ ਦੀ ਬਾਤ ਅਸਲ ਪ੍ਰਚਾਰ ਨੂੰ ਰੌਲੇ ਦੀ ਬਾਤ ਆ ਹੋਰੇ ਰੌਲਾ ਪਾ ਦੋ ਅਸਲ ਨੂੰ ਤੇ ਆਉਣੇ ਨੂੰ ਦੋ ਦੋ ਤਾਂ ਕਿ ਆਪ ਛੁਪੇ ਰਹੀਏ ਰਿਆਰ ਤੇ ਸਾਡੇ ਵੱਲੋਂ ਨਾ ਕੋਈ ਚੱਕੇ ਗਲਤ ਹੈ ਇਹ ਮੇਚੂ ਇਸੇ ਨੂੰ ਗੁਰਬਾਣੀ ਪਰੇ ਕਰਦੀ ਹੈ ਇਹ ਪਾਣੀ ਦੇ ਬੂਰ ਹੈ ਪਾਣੀ ਦੇ ਬੂਰ ਕੀ ਹੁੰਦਾ ਬੂਰ ਹੋਵੇ ਬੂਰ ਨੂੰ ਢੱਕ ਲੈਂਦਾ ਅਸਲੀਰ ਨੂੰ ਢੱਕ ਲੈਂਦਾ ਇਹਦਾ ਬੂਰ ਪਾਇਆ ਹੈ ਲੋਕਲਾ ਪ੍ਰਚਾਰ ਕਰਤਾ ਸਾਰਿਆਂ ਦੇ ਅੰਦਰ ਪਾਣੀ ਦੇ ਬੂਰ ਪਾਤਾ ਪਤਾ ਹੀ ਨਹੀਂ ਕੀ ਹੈ ਗੁਰਬਾਣੀ ਮੂਰਪਾਤਾ ਹਰ ਤੇ ਉਹ ਗਾਣੇ ਨੇ ਬੋਲ ਨੂੰ ਕਰਿਆ ਕਰਕੇ ਪੀਓ ਪਾਣੀ ਹਮਮ ਆਹਨ ਮਾਇਆਮਾਦੀ ਗੱਲ ਨਹੀਂ ਚੱਲ ਰਹੀ ਕਿਤੇ ਨਾ ਨਾ ਕਦੇ ਬੈਠੇ ਨੇ ਛੱਡਣਾ ਇਹਦੀ ਗੱਲ ਰੌਲਾ ਪਾ ਦੋ ਰਸ਼ਿਆਂ ਦਾ ਰੌਲਾ ਪਾ ਦੋ ਬਾਕੀ ਸਿੱਖੀ ਦੀ ਲੋੜ ਨਹੀਂ ਗੱਲ ਤਾਂ ਹੈ ਰਹਿ ਗਿਆ ਕੋਈ ਜੈਕਟਰ ਨਹੀਂ ਬਾਣੀ ਤਾਂ ਨਸ਼ਿਆਂ ਦੀ ਗੱਲ ਨਹੀਂ ਹੈ 12ਵਾਂ ਆਈ ਨਹੀਂ ਹੁੰਦਾ ਹੈ ਨਾ 12ਵਾਂ ਆਈ ਨਹੀਂ ਹੁੰਦਾ ਵੀ ਸਹੀ ਰਹਿਤ ਛੱਡਣ ਨਾਲ ਦਿਲ ਨੂੰ ਜੁੜੇ ਨਸ਼ੇ ਕਰਨ ਨੇ ਸਾਡੇ ਕੋਲ ਇਹਨਾਂ ਦੇ ਵਿੱਚ ਸ਼ਰਾਬ ਚੜਦੀ ਹੈ ਇਹਨੂੰ ਚੰਡੀ ਦੇ ਸ਼ਰਾਬ ਚੜਦੀ ਕਾਲ ਦੀ ਸ਼ਰਾਬ ਚੜਦੀ ਭਾਈ ਦੇ ਸ਼ਰਾਬ ਚੜਦੀ ਪੈਰੋਂ ਦੇ ਸ਼ਰਾਬ ਚੜਦੀ ਸ਼ਿਵ ਦੇ ਸ਼ਰਾਬ ਚੜਦੀ ਮਾਰ ਚੜਦਾ ਤੁਸੀਂ ਕੀ ਕਹਿ ਸਕਦੇ ਆ ਬਣੋ ਜਿਸ ਨੂੰ ਨਹੀਂ ਕੀਤਾ। ਔਰ ਮਿੱਠਾ ਹਲਕੇ ਜਾਂਦਾ ਹੀ ਖੱਟਾ ਬਣ ਜਾਂਦਾ। ਹਲਕਾ ਜਾਂਦਾ ਹੀ ਖੱਟਾ ਬਣ ਜਾਂਦਾ ਜੋ ਵੀ ਹਜਮ ਹੋਣ ਤੇ ਪਹਿਲਾਂ ਸਾਡੇ ਅੰਦਰ ਉਹੀ ਅੰਦਾਜ਼ ਬਣਦੇ ਨੇ ਜਿਹੜੇ ਗੋਡਿਆਂ ਵਿੱਚ ਉੱਥੇ ਬਣਦੇ ਨੇ। ਜਿੰਨੇ ਜਾਂਡੇ ਕੋਲ ਦਵਾਈਆਂ ਨੇ ਜਿਵੇਂ ਅਰੈਸਟ ਨੇ ਅਰੈਸਟ ਉਹ ਸਾਰਿਆਂ ਦੇ ਅਲਕੋਹਲ ਕਰਦੀ ਇਧਰ ਅਲਕੋਹਲ ਆਉਂਦੀ ਸੀ ਅਲਕੋਹਲ ਹੈ ਅਲਕੋਹਲ ਹੈ ਆ ਗੇਰਾ ਹੋਮਿਓਪੈਥਿਕ ਹੋਮਿਓਪੈਥਿਕ ਦੇ ਵਿੱਚ ਬੇਨ ਦਵਾਈਆਂ ਅਲਕੋਹਲ ਅਲਕੋਹਲ ਇਹੋ ਜਿਹੜਾ ਬੇਨ ਇਹ ਜੜ ਤੋਂ ਹਰੇਕ ਬਿਮਾਰੀ ਨੂੰ ਉਹਦੇ ਵਿੱਚ ਇੱਕ ਵਸਤੀ ਹੈ कर ਬਿਮਾਰੀ ਨੂੰ ਜੜ ਤੋਂ ਕਰ ਦਈਏ ਲੱਗ ਜਾ ਤਾਂ ਜੜੀ ਚਲਦੀ। ਸਮਝ ਗਏ ਤੁਸੀਂ ਕਹਿੰਦੇ ਕੀ ਗਰਾਊਂਡ ਹੈ ਤੁਹਾਡੇ ਕੋਲ ਕਿਵੇਂ ਕਹਿ ਸਕਦੇ? ਦੁਰੀਆਣਾ ਗੱਲ ਸੁਣੀ ਹੈ ਉਹਦੀ 1% ਅਲਿਪ ਬੋਲੁੰਦੇ ਕਿਸਨ ਸੁਣੀ ਹੈ ਨਾ ਦੀ ਗੱਲ ਵੰਨੀ ਕਿਸਨ ਗੱਲ ਸ਼ਰਾਬ ਵਰਨਾ ਕਰਦੇ ਕੋਪਰਨਾ ਆਪਣਾ ਜੀਵਨ ਇਸ ਕਰਕੇ ਨਾਨਕ ਨਹੀਂ ਕਰ ਰਿਹਾ ਹੈ ਨਾ ਗੁਰਬਾਣੀ ਦੀ ਗੱਲ ਕਰਦੀ ਹੈ ਇਹ ਵਿਸ਼ਾ ਹੀ ਨਹੀਂ ਹੈ ਗੁਰਬਾਣੀ ਦਾ ਸਰੀਰ ਤੇ ਖਾਣ ਪੀਣ ਦਾ ਵਿਸ਼ਾ ਹੈ ਹਾਂ ਐਸੀ ਗੱਲ ਜਰੂਰ ਕਹੀ ਹੈ ਐਸੀ ਮਦ ਮੂਦੇ ਦਾ ਪੀਜੇ ਐਸੀ ਬੰਦ ਕੈਸੀ ਮਦ ਐਸੀ ਮਦ ਜੋ ਮੜੇ ਕੈਸੀ ਮਦ ਲੋ ਬੁਝਾਰਦਾ ਐਸੀ ਮਤਲਬ ਜੇ ਕਾ ਪਾ ਜੇ ਜੇ ਤਾਂ ਹਰ ਵੇਸ ਰਾਇ ਉਹ ਕੀ ਹੋਰ ਘਾਰੇ ਹਰ ਨੂੰ ਵੇਸ ਰੋ ਹੋਰ ਕੋਲ ਬੋਤਰ ਉਹ ਕਰੂਗਾ ਜੇ ਕੋਈ ਗਲਤੀ ਕਰ ਰਿਹਾ ਜਦ ਮਾਫੀ ਮੰਗ ਲੈਂਦਾ ਬਾਅਦ ਚ ਜੇ ਕਿਸੇ ਤੇ ਗਲਤੀ ਹੋ ਗਈ ਜਾਂ ਕਹਿੰਦਾ ਮੈਨੂੰ ਪਤਾ ਨਹੀਂ ਲੱਗਿਆ ਉਹ ਗਲਤ ਕਰ ਲੈਣਾ ਬਾਅਦ ਵਿੱਚ ਬਗਲਣਾ ਹਰਦੂ ਉਤਰਦਾ ਇਹ ਨਾ ਜੇ ਪਰਨ ਤਨੇ ਖਰਾਬ ਤੇ ਖਰਾਬ ਪ੍ਰਚਾਰ ਕੀਤਾ ਕੀਤਾ ਪਰਨ ਖਰਾਬ ਨਹੀਂ ਕੀਤਾ ਪਰਦ ਨੂੰ ਕਪਟੀ ਕਹਦੇ ਕੰਨੀ ਮੜੀ ਕਪਟੀ ਕਹਦੇ ਕਾਫਟ ਬਗਾਇਆ ਰਸ਼ਿਆ ਕਰੂਗਾ ਮੈਸੇਜ ਕਫਟ ਹੋਈ ਨਹੀਂ ਸਕਦਾ ਸੱਚ ਬੋਲਦੇ ਕਹਿੰਦਾ ਮੂੰਹ ਤੇ ਹੀ ਗਾਲ ਕਰਦੇ ਜੇ ਉਹ ਨਹੀਂ ਨਾ ਕਹਿ ਸਕਦਾ ਜਿਹੜੀ ਗੱਲ ਉਹਦਾ ਅੰਦਰ ਰੱਖੇ ਨਹੀਂ ਰੱਖਦਾ ਕਰ ਉਹਦੇ ਅੰਦਰ ਰਹਿੰਦੀ ਹੋਈ ਨਹੀਂ ਜਿਹੜਾ ਅੰਦਰ ਰੱਖ ਕੇ ਗੱਲ ਕਰਦਾ ਨਾ ਬੰਦਾ ਉਹ ਕਪੜੀ ਹੈ ਉਹ ਕਪੜੀ ਇਹ ਤਾਂ ਕਪੜਾ ਨੂੰ ਬਹੁਤ ਬਹੁਤ ਐਤ ਦੇ ਆਖੇ ਚੰਨੇ ਗੱਲ ਕੋਈ ਦੇ ਆਸ ਤੇ ਨਹੀਂ ਆਪਾਂ ਇਹ ਦੇਖਦੇ ਆ ਪ੍ਰੈਕਟੀਕਲੀ ਗੱਲ ਹੈ ਵਿਚਾਰਦੇ ਆ ਇਸ ਗੱਲ ਸਾਹਮਣੇ ਕੀ ਹੱਕ ਤੇ ਨਹੀਂ ਪਾਸੇ ਆਪਾਂ ਇਹਨੂੰ ਛੋੜੀ ਚੀਜ਼ ਮੰਨ ਰਹੇ ਆ ਇੱਕ ਪਾਸੇ ਪ੍ਰੈਸ਼ਰ ਪਾ ਰਹੇ ਕੋਈ ਗੱਲ ਨਹੀਂ ਹੈ ਜੀ ਨਹੀਂ ਕਿੰਦਾ ਚਲੋ ਗੱਲ ਵਿੱਚ ਖਤਮ ਹੋ ਗਿਆ ਗੱਲ ਜਿਹੜੀ ਮੇਨ ਚੱਲ ਰਹੀ ਓਥੇ ਉਹ ਅੰਦਰਲੇ ਮਾਦੋਦੀ ਚੱਲ ਰਹੀ ਹੈ ਨਾਲੇ ਬਾਹਰਲੇ ਦੀ ਬਾਹਰਲੇ ਦੀ ਕੱਲੇ ਨਹੀਂ ਬਾਹਰਲੇ ਸ਼ੀਰ ਬਾਹਰਲੇ ਨੂੰ ਖੇਡਣ ਦੀ ਲੋੜ ਨਹੀਂ ਆਪਾਂ ਜਿਹੜੇ ਸ਼ਬਦਾਂ ਵਿੱਚ ਚੱਲਦੀ ਹੈ ਉਹ ਨਾਲ ਰਿਲੇਟਡ ਕਰੀ ਜਾ ਰਹੀ ਹੈ ਨਾ ਗੱਲ ਅੰਦਰਲੀ ਛੱਡ ਪਾ ਆਈ ਅੱਜ ਰੋਣਾ ਸਿੱਖਾਂ ਦੇ ਸਾਰੇ ਇਸੇ ਤੇ ਪਾਇਆ ਹੈ ਨਹੀਂ ਉਹ ਗਲਤ ਹੈ ਮੈਂ ਨਹੀਂ ਕਿਹਾ ਪਾ ਕਹਿ ਰਹੇ ਕਿ ਉਹ ਗੱਲ ਗਲਤ ਹੈ ਕਿڑی ਮਦ ਮੇਰ ਹੈਗੀ ਉਹਦੀ ਆਪਾਂ ਕਰੋ ਉਹ ਜਾਨ ਉਹ ਨਹੀਂ ਹੋ ਰਹੀ ਹੈ ਨਾਲ ਤਾਂ ਉਸੇ ਤੇ ਰਿਲੇਟਡ ਹੈ ਇਹ ਉਹੀ ਗੱਲ ਕੀਤੀ ਆਪਾਂ ਨੇ ਉਸ ਨਾਲ ਰਿਲੇਟਡ ਹੈ ਇੱਕ ਗੱਲ ਉਹ ਜਦ ਬਾਹਰ ਤੁਸੀਂ ਐਨਾ ਰੌਲਾ ਪਾਟਦਾ ਸਾਰਾ ਧਰਮ ਦਾ ਫੇਸ ਹੈ ਗੱਲ ਪਾਉਣੇ ਕਰ ਰਹੇ ਤੇ ਗੱਲ ਆਮੰਦ ਘਟਣ ਦੀ ਸੀ ਕਿ ਉਹਨਾਂ ਨੇ ਦੁੱਧ ਘਟਾਉਣੀ ਸ਼ੁਰੂ ਕਰਦੀ ਗੱਲ ਤਾਂ ਇਹ ਨਹੀਂ ਗੱਲ ਧਰਮ ਨੇ ਮੈਂ ਤੁਹਾਨੂੰ ਦ ਹਿੰਦੂ ਧਰਮ ਦੇ ਵਿੱਚ ਪਾਰਟੀ ਵਾਜੀ ਇੱਕ ਧਰਮ ਹਿੰਦੂ ਹੈ ਜਿਹੜਾ ਪੁੱਤ-ਪਾਪ ਨੂੰ ਮੰਨਦਾ ਨਹੀਂ ਉਹ ਹਿੰਦੂ ਹੈ ਇੱਕ ਬੰਦੂ ਬਾਬ ਨੂੰ ਮੰਨਦਾ ਦੋ ਇਹ ਦੋਨੇ ਇੱਕ ਇਹ ਨੂੰ ਮੰਨਦਾ ਨਹੀਂ ਹੈ ਵੀ ਇਹ ਗਲਤ ਹੈ ਇੱਕ ਇਹ ਨੂੰ ਮੰਨਦਾ ਗਲਤ ਹੁਣ ਅਗਰ ਵਤਵੇ ਤਾਂ ਜੋ ਨੇ ਸਾਰੇ ਜਿੰਨੇ ਸੀਗੇ ਨਾ ਸਿੱਧ ਸਾਰੇ ਦੋਈ ਚੀਜ਼ਾਂ ਦਾ ਸੇਵਨ ਕਰਦੇ ਬਹੁਤ ਸ਼ਰਮ ਆਉਂਦੀ। ਕੁਲ ਵੀ ਕਰਦੇ। ਪੰਡਤਾਂ ਤੋਂ ਖਿਲਾਫ ਨੇ। ਉਹ ਜਿਹੜਾ ਉਹ ਬਾਤਾਂ ਨੇ ਸਿੱਧਾ ਹੁੰਦਾ ਉਹ ਪੰਡਤਾਂ ਖਿਲਾਫ ਹੈ। ਪੰਡਤ ਕਰ ਤੋਂ ਬਰਨ ਕਰਨ ਲੱਗੇ ਹੁਣ ਸਵਾਲ ਇਹ ਹੈ। ਮੈਂ ਇਹਦੀ ਹਿਸਟਰੀ ਹੋ ਜਾਣਾ। ਪੰਡਤ ਜੱਤੋਂ ਬਰਨ ਕਰਨ ਲੱਗੇ ਆ ਰਾਜੇ ਦਾ ਪੰਡਤ ਗੁਲਾਮ ਹੋ ਗਿਆ। ब्राह्मण जबो पंडित बन गया ना ब्राह्मण दा मतलब ब्रह्मज्ञानी ब्रह्मज्ञान दा प्रचार करना ब्राह्मण दा काम सी कहदे विद्वान हो गया विद्वान रह गया राजे दे खरीद लिया विद्या बेचण लाग गया विद्या दा पैसा पट्टण लाग गया विद्वान होके नौकरी करना लाग गया उधो पंडित रह गया बाबूजी रे कौन है पंडिया कब के बाबू ब्राह्मण करके जन्म वत् होए ਨਾਂ ਪਰ ਸੋਜੋ ਬ੍ਰह्म ਬ੍ਰह्म ਵਿਚਾਰ ਹੈ ਸੋ ਬ੍ਰਾਹਮਣ ਕਹੀ ਹੈਗਾ ਬ੍ਰਾਹਮਣ ਦਾ ਵਿਚਾਰ ਕਰੇ ਦਾ ਵਿਦਿਆ ਲੈਣਾ ਵਿਦਿਆ ਬੈਠਣਾ ਚਾਹੀ ਯੂਨੀਵਰਸਿਟੀ ਚ ਬਿਕਤੀ ਹੈ ਚਾਹੀ ਕਿਤੇ ਬਿਕਤੀ ਹੈ ਜੈ ਸਕਾਲਜਸ ਸਕੂਲਾਂ ਚ ਬਿਕਤੀ ਹੈ ਵਿਦਿਆ ਇਹਨਾਂ ਨੂੰ ਗੁਰਬਾਣੀ ਮਨੁੱਖ ਮਨ ਹੈ ਮਨੁੱਖ ਵਿਦਿਆ ਵਿਕਰਦਾ ਬੇਸਖਟੇ ਬੇਖਾ ਯੂਨੀਵਰਸ ਜੀਂ ਕਿੰਨਾ ਦੀ ਇੱਜ਼ਤ ਕਹੋਬ ਆਪਣੇ ਆਪ ਨੂੰ ਗੁਰੂ ਕਹੋ ਨਾ ਗੁਰੂ ਉਹ ਕਹੋ ਨਾ ਜਿਹੜੇ ਵਿੱਦਿਆ দান ਦਿੰਦੇ ਹੁੰਦੇ ਨੇ ਜਿਹੜੇ ਵਿੱਦਿਆ ਦਾ ਦਾਨ ਕਰਦੇ ਨੇ ਜਿਹੜੇ ਵਿੱਦਿਆ ਵੇਚਦੇ ਨੇ ਗੁਰੂ ਨਹੀਂ ਹੁੰਦੇ ਉਹ ਮਨੁੱਖ ਵਿੱਦਿਆ ਵਿਕਰਦਾ ਬੇਖੱਟੇ ਰਾਜੇ ਨੇ ਪ੍ਰਚਾਰ ਕਰਵਾਇਆ ਤੇ ਬੰਮ ਤੋਂ ਫਿਰ ਹੈ ਰਾਜੇ ਜਦ ਰਾਜਾ ਹੋ ਗਿਆ ਇਹ ਤੋ ਉਹਨੇ ਸ਼ਰਾਬ ਦੇ ਤੇ ਆਵੇਂ ਆਮ ਲੋਕ ਨਾ ਪੀਣ ਜਾਣ ਮੈਂ ਉਹਨੂੰ ਜਸ ਪੀਣ ਇੰਦਰ ਆਪ ਸ਼ਰਾਬ ਪੀਂਦਾ ਰਾਜਾ ਦਾ ਦੇਵਤਾ ਜਾਂ ਇਹਦਾ ਦੇਵਤਾ ਦਾ ਰਾਜਾ ਸ਼ਰਾਬ ਪੀਂਦਾ ਦੇਵਤੇ ਵੀ ਆ ਰੀਨੇ ਇੰਦਰ ਨੂੰ ਮੰਨਦੇ ਨੇ ਰੋਕਦੇ ਵੀ ਨਾ ਇਹਦਾ ਗੁਰੂ ਪੀਉ ਸ਼ਰਾਬ ਅਸਿਰ ਵੀ ਗੁਰੂ ਨੇ ਅਸੀਂ ਕਹਿ ਨਹੀਂ ਸਕਦੇ ਸਮਝਦਾ ਨਾ ਪਰ ਉਹਨਾਂ ਦਾ ਦੇ ਅੰਦਰ ਪਿੰਦਾ ਉਹ ਦਲੀਲ ਦਿੰਦੇ ਨੇ ਦੀ ਇਹ ਤਾਂ ਉਹ ਸੁਰਾਇਦੇ ਪਿੰਦੀ ਚੀਜ਼ ਹੈ ਰਾਜੇ ਨੂੰ ਖਤਰਾ ਸਵਾਲ ਨੇ ਰਾਜੇ ਨੂੰ ਖਤਰਾ ਰਾਜੇ ਨੂੰ ਭੂਰੇ ਬੋਲ ਬੰਦੇ ਜਰਾਪੀ ਖਤਰਾ ਨਹੀਂ ਪਰ ਧੰਦਾ ਰੌਣ ਧੰਦਾ ਦਾ ਪੂਰੇ ਵਰਗੂ ਸਰਪੀ ਤੋ ਤਾਂ ਦਬਰ ਬੰਨੀ ਰਹਿਣਾ ਰਾਜ ਕਰਨ ਉਹਨੂੰ ਡਰਾ ਕੇ ਆਗਰ ਉਹ ਆਪਣੇ ਉਹਦਾ ਆਪਣਾ ਪਰਸਨਲ ਇੰਟਰਸਟ ਹੈ ਉਹਦੇ ਵਿੱਚ ਧਰਮ ਦੀ ਕੋਈ ਗੱਲ ਨਹੀਂ ਆਪਣੀ ਇੱਜ਼ਤ ਦਾ ਸਵਾਲ ਹੁੰਦੀ ਹੈ ਸਮਝੇ ਗੁਰ ਨਾ ਧਰਮ ਦਾ ਸਵਾਲ ਹੈ ਜਦ ਕੋਈ ਹੁੰਦਾ ਸਵਾਲ ਨਹੀਂ ਆਪਣੇ ਗੁਰਾਂ ਨੇ ਨਹੀਂ ਪੀਤੀ ਐ। ਨਹੀਂ। ਤੁਸੀਂ ਪੀਤੀ ਆ। ਜਿਹਦਾ ਗੁਰੂ ਪੀਤਾ ਪੀ ਸਕਦਾ ਐ। ਨਹੀਂ ਪੀਤੀ ਗੇ। ਕਹਿੰਦਾ ਵੀ ਮੈਂ ਕਹਿੰਦਾ ਪੀਤੀ ਫੇਰ। ਨਹੀਂ ਪੀਤੀ ਗੇ। ਤਾਂ ਹੋਰ ਪਾਸੇ ਸੀ ਜੀ ਤਾਂ ਪਾਸੇ ਖੜਾ ਸੀ। ਮੈਂ ਕਹਿੰਦਾ ਦੇਖਿਆ ਨੇ ਪੀਤੀ ਮਤਲਬ ਜੀ ਫੇਰ? ਕਿ ਉਹ ਇੰਦਰ ਦੇ ਇਹ ਗੱਲ ਕੀਤੀ ਵੀ ਇੰਦਰ ਨੇ ਇੰਦਰ ਦੀ ਗੱਲ ਕੀਤੀ ਇੰਦਰ ਦੀ ਗੱਲ ਇੰਦਰ ਨੇ ਆ ਉਹ ਸਿਮਰਤੀ ਜਿਹਾ ਲਿਖਿਆ ਹੋਇਆ ਉਹ ਗੁਰੂਆਂ ਨਹੀਂ ਦਿੱਤੀ ਗੁਰੂ ਇੰਦਰ ਸੀ ਗੁਰੂ ਸ਼ਿਕਾਰ ਖੇਡਦੇ ਸੀ ਅਸੀਂ ਕਹਿੰਦੇ ਵੀ ਗੁਰੂ ਸ਼ਿਕਾਰ ਖੇਡਦੇ ਸੀ ਅਸੀਂ ਸ਼ਿਕਾਰ ਖੇਡ ਸਕਦੇ ਹਾਂ ਗੁਰੂ ਖਾਂਦੇ ਦੀ ਅਸੀਂ ਖਾ ਸਕਦੇ ਹਾਂ ਇਹੀ ਦਲੀਲ ਲਾਉਂਦੇ ਨਾ ਉਹ ਕਹਿੰਦੇ ਨੇ ਮਾਂ ਸਾਡਾ ਬਾਪਾ ਅਸੀਂ ਤੇ ਨਹੀਂ ਪਾਉ ਤੁਹਾਨੂੰ ਹੋਊਗਾ ਗੱਲੇ ਨਾ ਤੁਹਾਨੂੰ ਬਾਪਾ ਪਾਪੋ ਸੁਬਰੇ ਬਸ ਰਹੀ ਦਲੀਲ ਇਹੀ ਦਊਂਗੇ ਤੁਸੀਂ ਪਤਾ ਤੇ ਗੁਰੂ ਜੀ ਸ਼ਕਾਰ ਖੇਡੇ ਸ਼ਕਾਰ ਖੇਡੇ ਨਹੀਂ ਸ਼ਕਾਰੀ ਖੇਡੇ ਉਹ ਦੇਖ ਕੋਈ ਸ਼ਿਕਾਰੀ ਮੈਨੂੰ ਦਿਖਾਓ ਵੀ ਮਾਰ ਦਿੰਦਾ ਹੋਵੇ ਮਾਸਰਾ ਸਤਿਗੁਰੂ ਮਾਸਰਾ ਮਾਰਨਾ ਔਖਾ ਹੈ ਸ਼ਿਕਾਰ ਖਾਣਾ ਔਖਾ ਖਾਣਾ ਔਖਾ ਅਚਕੜਾ ਮਾਨਸਾਣ ਵਾਲੇ ਕਿ ਝਟਕਾ ਨਹੀਂ ਕਰਦਾ ਦੇਖ ਸਕਦੇ ਹਾਂ ਝਟਕਾ ਉਹਨਾਂ ਦੇਖ ਨਹੀਂ ਸਕਦੇ ਖਾ ਰਹੇ ਕਹਿੰਦੇ ਨਾ ਵੀ ਮੈਨੂੰ ਪਾਰੀ ਚ ਜਾਣਗੇ ਐਸਾ ਸ਼ਿਕਾਰੀ ਮੈਨੂੰ ਦੁਨੀਆ ਦੱਸੋ ਇਹ ਰਾਮਚੰਦਰ ਸ਼ਿਕਾਰ ਘੜਤ ਸੀ ਮਾਨਸਾਣਦਾ ਸੀ ਝੂਠ ਦੇ ਉੱਤੇ ਸਾਰੇ ਤਾਂ ਉਠੜੇ ਨੇ ਅੰਤਰਮ ਪ੍ਰਚਾਰ ਦੇ ਜਿਹੜੇ ਥੋੜਾ ਜਿਹਾ ਪੜ ਲੈਂਦੇ ਨੇ ਤਾਂ ਉਹਨੂੰ ਪਤਾ ਲੱਗਦਾ ਵੀ ਝੂਠ ਚੱਲਦਾ ਧਰਮਾਂ 'ਚ ਜਿੰਨਾ ਧਰਮ 'ਚ ਝੂਠ ਚੱਲਦਾ ਲੋਬੇ ਸਮਝਦਾ ਕੋਈ ਕਿਤੇ ਨਹੀਂ ਚੱਲਦਾ ਜਿਹੜਾ ਸੀਗਾ ਆਪਣਾ ਲੰਮ ਡਾਈ ਲੰਮ ਹੁਣੇ ਬਿਆਨ ਆਇਆ ਸ਼ੇਖ ਦੁੱਲੇ ਨੂੰ दुनिया ਦੇ ਧਰਮਾਂ ਨੂੰ ਨੇ ਸਾਰਿਆਂ ਨੂੰ ਇੱਕ ਕਿਸਮ ਦਾ ਬਹਿਸਮਦਾ ਇੱਕ ਬੈਂਟੀ ਆਫੀਸਰ ਵੀ ਆਪਾਂ ਨੂੰ ਸਾਰਿਆਂ ਨੂੰ ਆਪਣੇ ਧਰਮਾਂ ਚੋਂ ਜਿਹੜਾ ਝੂਠ ਹੈ ਬਾਹਰ ਕੱਢ ਕਰਨਾ ਚਾਹੀਦਾ ਟੋਟਲ ਧਰਮ ਦੁਨੀਆ ਜੇ ਦੁਨੀਆ ਬਚਾਉਣੀ ਹੈ ਜੇ ਝੂਠ ਬਾਹਰ ਕੱਢ ਗਏ ਸਾਰੇ ਧਰਮ ਜੇ ਇਹ ਗਣਾ ਚੂੜ ਬਾਹਰ ਕਢਦੀ ਐ ਨਾ ਬੱਚੋ ਧਰਮਾਂ ਚੋਂ ਫੇਰ ਆਪਾਂ ਇੱਕ ਤੇ ਆ ਗਏ ਪਰ ਅਗਰ ਨਹੀਂ ਤੇ ਇਹ ਨਹੀਂ ਬੈਰ ਹਲਸਾ ਧਰਮਾਂ ਦੇ ਇਹਨੇ ਇਹ ਮਾਡਲ ਸਭ ਚੂੜ ਕਰਕੇ ਨੇ ਔਰ ਕੁਛ ਨਹੀਂ ਆ ਆਪਣੀ ਆਪਣੀ ਹੋ ਝੂਠੇ ਬਣਾਈ ਬੈਠੇ ਨੇ ਅਡ ਅਡ ਚੂੜ ਦੇ ਸਤੇ ਜਦੋਂ ਲੇਖ ਲਿਖਿਆ ਸੀ ਉਹ ਹਉਲ ਤੇ ਨਾਮ ਤੇ ਰਸਿਮ ਉਤੇ ਜਪਤੇ ਔਰ ਅਰਾਧਨ ਉਤੇ ਤਲਵਾੜਾ ਹੀ ਤਣ ਫਿਆ ਸੀ ਨਾ ਜਦੋਂ ਉਹਨੂੰ ਕਿਹਾ ਤਲਵਾੜੇ ਨੂੰ ਵੀ ਪਾਈ ਆਪਾਂ ਵਿਚਾਰ ਕਰ ਲੈਣੇ ਜੇ ਜਿਹੜੀ ਗਲਤ ਕਿਆਤਾ ਤੂੰ ਦੱਸ ਵੀ ਆਹ ਗਲਤ ਗੁਰਬਾਣੀ ਤੋਂ ਗੁਰਬਾਣੀ ਤੋਂ ਖਰਾਬ ਹੋ ਕੋਈ ਪੰਕਤੀ ਦੇ ਕੋਈ ਗੱਲ ਕਰ ਚਮਕੌਰ ਸੰਗਤ ਨੂੰ ਬੁਲਾ ਲੈਣੇ ਬੁਲਾਉਣਾ ਨਹੀਂ ਗੱਲ ਉਹ ਨਹੀਂ ਕਰਨੀ ਗੁਰਬਾਣੀ ਤੋਂ ਖਲਾਬ ਨਹੀਂ ਪਰ ਇਹ ਗਲਤ ਹੈ ਕਿਉਂ ਅਸੀਂ ਗੱਲ ਕਹਨੇ ਹਾਂ ਵੇ ਗੁਰੂ ਵੇ ਗੁਰੂ ਨਾ ਪਰ ਕਹਦਾ ਤੂੰ ਗੁਰਬਾਣੀ ਦੇ ਹਿਸਾਬ ਨਾਲ ਭਾਈ ਗੁਰਦਾਸ ਸਿੰਘ ਮਹਾਰਾਜ ਦੀ ਗੁਰਬਾਣੀ ਠੀਕ ਹੈ ਭਾਈ ਗੁਰਦਾਸ ਸਿੰਘ ਮਹਾਰਾਜ ਜਿਹੜੇ ਆਪਾਂ ਦੇ ਰਹੇ ਆ ਤੁਸੀਂ ਜਿਹੜੇ ਇਤਿਆਹ ਦੇ ਵਿੱਚ ਵਰਸ਼ਨ ਦਿੱਤੇ ਨੇ ਵੀ ਆਪਾਂ ਇਤਿਆਹ ਦੇ ਵਿੱਚ ਇਦਾਂ ਆਇਆ ਉੱਥੇ ਮੰਦਿਰਾਂ ਚ ਖਾਂਦੇ ਨੇ ਜੋ ਵੀ ਕਰਦੇ ਨੇ ਗੁਰਬਾਣੀ ਤੇ ਆਣੀ ਹੈ ਕੀ ਜਦ ਆਪਾਂ ਇੱਕ ਵਾਰ ਤਾਂ ਗੁਰਬਾਣੀ ਨੂੰ ਲੈ ਕੇ ਬੱਠੇ ਆਂ ਤਾਂ ਉਹ ਆ ਜੇ ਤੁਸੀਂ ਕਹੇ ਕੱਟਣ ਨੂੰ ਜਾ ਰਹੇ ਹਾਂ ਹਨ ਆਪਾਂ ਪਕੜ ਕੇ ਬੱਠੇ ਆ ਬਾਣੀ ਦੇ ਵਿੱਚੋਂ ਆਪਣੀ ਉਹ ਕਹਿ ਰਹੇ ਨੇ ਨਾ 'ਚ ਖੜਾ ਜਾ ਰਹੇ ਮੈਂ ਉਹਨਾਂ ਦੀ ਉਹ ਗੱਲ ਲੈ ਆਪਣੀ ਵੀ ਉਹ ਨਾਲ ਦੇ ਇਹ ਉੱਥੇ ਇਹ ਗੱਲ ਉਹ ਤਾਂ ਉਹਨਾਂ ਨੇ ਮਦਰਾਂ ਦੀ ਗੱਲ ਆ ਪਕੜਾ ਨੂੰ ਮੰਨਦੇ ਆ ਉਹਨਾਂ ਦੀ ਦੋ ਧੜੇ ਮੰਗਿਆ ਵੀ ਦੋ ਧੜੇ ਨੇ ਉਹਨਾਂ ਦੇ ਤਾਂ ਉਹਨਾਂ ਦੀ ਗੱਲ ਕਰਦੇ ਜਾਣਾ ਆਪਣੀ ਨਹੀਂ ਕਰਦੇ ਉਹਨਾਂ ਭਾਈ ਗੁਰਦਾਸ ਆ ਆਪਣਾ ਰਿਸ਼ਤਾ ਉਹਨਾਂ ਨਾਲ ਨਹੀਂ ਲੈ ਸਾਡੇ ਧੜਾ ਹੀ ਕਰੇ ਭਾਈ ਗੁਰਦਾਸ ਕਰਦਾ ਗੁਰਦਾਸ ਕੀਤਾ ਭਾਈ ਗੁਰਦਾਸ ਰਿਲੇਟਡ ਮੈਂ ਗੱਲ ਕਦੇ ਨਹੀਂ ਕਰੂੰਗਾ ਉਹਦੀ ਜਿਹੜਾ ਸਾਡੇ ਦਰਜ ਪਾਰ ਪਉਂਦਾ ਮੈਂ ਕਦੇ ਵੀ ਗੱਲ ਕਰੂੰਗਾ ਉਹਦੀ उन्हें ਸਾਡੇ ਪਾਰਟੀਸ਼ਨ ਬਣਾ ਦਿੱਤਾ ਉਹਨਾਂ ਦੇ ਪਾਰਟੀਸ਼ਨ ਹੋਈ ਆ ਉਹ ਜਾਣ ਕਿਉਂ ਹੋਈ ਹੋਈ ਹੈ ਪਰ ਜਿਹੜੀ ਸਾਡੇ ਪਾਰਟੀਸ਼ਨ ਹੋਈ ਉਹ ਕੌਣ ਹਟਾਊਗਾ ਮੈਂ ਤਾਂ ਆਪਣੀ ਪਾਰਟੀਸ਼ਨ ਦੀ ਗੱਲ ਕਰਦਾ ਨਾ ਸਾਡੀ ਪਾਰਟੀਸ਼ਨ ਕੌਣ ਹਟਾਊਗਾ ਫਿਰ ਉਹਨੇ ਇਹ ਕਿਹਾ ਆਖਰ ਵੀ 60 ਸਾਲ ਹੋ ਗਏ ਨਜਰ ਹੋ ਕੇ ਆਉਣਾ ਸੀ ਕਰ ਰਹੇ ਹੁਣ ਅਸੀਂ ਕਿਹੜੇ ਨੂੰ ਨਾ ਛੱਡਦੀ ਇਹ ਵੀ ਕੋਈ ਇਦਾਂ ਲਾ ਹੌਦ ਨੂੰ ਬਚਾਉਣ ਵਾਸਤੇ ਝੂਠ ਤੂਫਾਨ ਉੱਤੇ ਜਾਣਾ ਸਭ ਜਾਇਜ਼ ਹੋ ਰਿਹਾ ਕਿਸੀ ਕੇਵਲ ਤੂੰ ਜਾਣਦੇ ਹੋਏ ਵੀ ਤੁਸੀਂ ਇਹ ਗੱਲ ਕਰ ਰਹੇ ਹੋ ਕੀ ਅਪਰਾਧ ਨਹੀਂ ਹੈ ਇਹ ਤਾਂ ਅਪਰਾਧ ਹੈ ਸਿੱਕਾ ਵੀ ਹੈ ਕਿ ਅਸੀਂ ਉਹ ਸਿੱਖੋਗੇ ਅਪਰਾਧ ਕਰਾਂਗੇ ਤੇ ਦੁਸ਼ਮਣ ਦੀਆਂ ਲੋੜੇ ਕਦੇ ਕਿਸੇ ਦੂਜੇ ਨੇ ਕਿਸੇ ਧਰਮ ਨੂੰ ਖਰਾਬ ਨਹੀਂ ਕੀਤਾ ਜਦੋਂ ਵੀ ਕੋਈ ਧਰਮ ਫੇਲ ਹੋਇਆ ਉਹ ਧਰਮ ਦੇ ਮੰਨਣ ਵਾਲਿਆਂ ਨੇ ਨੂੰ ਫੇਲ ਕੀਤਾ ਚਾਹੇ ਤਾਂ ਘੁੱਸ ਬੈਠ ਕਰਕੇ ਆਏ ਹੋਣ ਫੇਲ ਕਰਨ ਵਾਸਤੇ ਇਹ ਹੋ ਸਕਦਾ ਹੈ ਇਹ ਬਹਾਤਵਾਂ ਨੂੰ ਫੇਲ ਕਰਨ ਵਾਸਤੇ ਦੂਜੇ ਨੂੰ ਫੇਲ ਕਰਨ ਕਿਸੇ ਮੂਮੈਂਟ ਨੂੰ ਫੇਲ ਕਰਨ ਵਾਸਤੇ ਸਰਦਾਰ ਆਪਣੇ ਵੱਲ ਵੜ ਦਿੰਦੀ ਹੈ ਇਹ ਹੋਵੇ ਸਾਡੇ ਜੀ ਵੜ ਕੇ और यह ਸਾਬਤ ਹੁੰਦੇ ਨੇ ਬੜੇ ਬੰਦੇ ਪਾਇਰਨ ਧੀਰਸੋਣੀ ਰਣ ਕੰਪਨੀ ਜਿਹੜੀ ਸੀ ਉਹ ਬੰਦੇ ਨੇ ਦਾਉਂ ਤੇ ਜਾਸਰ ਜਿਹਨਾਂ ਨੇ ਮੂਲ ਦੀਆਂ ਨਗਰੂਦ ਕੀਤਾ ਸੀ ਇਹ ਜਦੋਂ ਕੱਢੀਆਂ ਸੀ ਬਾਹਰ ਬਈ ਮੂਲ ਪਿਆ ਨਹੀਂ ਕੱਢੀਆਂ ਜਾਣੀਆਂ ਚਾਹੀਦੀਆਂ ਪਰਕਰਮਾਂ ਚ ਉਹ ਯੋ ਰਾਜ ਉਹਦੇ ਰਿਕਾਰਡ ਤੇ ਉਹਨਾਂ ਇਹਨਾਂ ਨੇ ਭਾਈ ਨਾ ਕਾਲੇ ਤੋਂ ਨਾਬੇ ਨੂੰ ਇੱਥੋਂ ਜਲਾਬਤਨ ਕਰਵਾਇਆ ਨਾਬੇ ਤੋਂ ਰਾਜੇ ਨੂੰ ਕਹਿ ਕੇ ਵੀ ਇਹਨੇ ਕਿਉਂ ਰਾਇ ਦਿੱਤੀ ਵੀ ਮੂਰਤੀਆਂ ਗੁਰਮੱਤ ਦੇ ਵਿੱਚ ਪੱਥਰ ਪੂਜਾ ਦਾ ਕੋਈ ਵਦਾਨ ਨਹੀਂ ਹੈ ਮੂਰਤੀਆਂ ਬਾਹਰ ਘਟੀਆਂ ਚਾਹੀਦੀਆਂ ਨੇ ਅੰਗਰੇਜ਼ ਨੂੰ ਨਹੀਂ ਸੀ ਪਤਾ ਇਸ ਗੱਲ ਦਾ ਫਾਂਸੋ ਤੋਂ ਰਹਿ ਲੈ ਲਈ ਕਾਲਸ ਨੇ ਕਹਤਾ ਵੀ ਉਹਨਾਂ ਦੇ ਵਿੱਚ ਨਹੀਂ ਆਜ਼ਾਦ ਹੈ ਸਾਨੂੰ ਪੱਥਰ ਕੋਈ ਉਹ ਕਹਿੰਦਾ ਹਾਂ ਹਾਂ ਇਹਨੇ ਕਿਉਂ ਕਿਹਾ ਪੂਰਾ ਹੱਕ ਤੇ ਖੜੇ ਨੇ ਉਹ ਮੂਰਤੀਆਂ ਦੇ ਵੀ ਕਿਉਂ ਕੋਈ ਉਹਨਾਂ ਨੂੰ ਸਿੱਖ ਮੰਨਦਾ ਅਸੀਂ ਉਹਨਾਂ ਨੂੰ ਸਿੱਖ ਬਣ ਸਾਨੂੰ ਤਾਂ ਪਤਾ ਹੈ ਜਦੋਂ ਇਹ ਗੁਰੂ ਗ੍ਰੰਥ ਸਾਹਿਬ ਜਗ੍ਹਾ ਦੇ ਬੰਦਾ ਨਹੀਂ ਬਣੀ ਕਟੋ ਚੌੜ ਪੈਣ ਦੀ ਗੱਲ ਹੈ ਚਲ ਬੰਦਾ ਨਹੀਂ ਬਣੀ ਹਾਂ ਸਾਡੇ ਕੋਲ ਆਇਆ ਕਹਿੰਦਾ ਵੀ ਸਾਡਾ ਤਾਂ ਜੋਰ ਨਹੀਂ ਪੈਦਾ ਅਸੀਂ ਤਾਂ ਵੋਟਾਂ ਲੈਣੀਆਂ ਜਾਇਦਾਦਾਰ ਨੂੰ ਕਹਿੰਦਾ ਵੀ ਤੁਸੀਂ ਕੁਝ ਕਰੋ ਤੇ ਨੇ ਮੈਨੂੰ ਦਿੱਤਾ ਵੰਡ ਕੇ ਕਿ ਨਹੀਂ ਬੋਰੀਆਂ ਚ ਪਾ ਕੇ ਗੰਭਾਈਂ ਚਾੜਾ ਦਾਂਗੇ ਕੋਈ ਹੱਥ ਲਾ ਕੇ ਦੇਖੀਂ ਤੁਸੀਂ ਕੀ ਲੱਗਦਾ ਗੁਰੂਗ੍ਰਾਮ ਸਾਹਿਬ ਦਾ ਉਹ ਬਾਣੀ ਨੂੰ ਗੁਰੂਗ੍ਰਾਮ ਸਾਹਿਬ ਸਾਡਾ ਇਹਨੇ ਨਹੀਂ ਮੰਨਣਾ ਨਾ ਬੰਦੂ ਇਹ ਐਵੇਂ ਹੀ ਤਾਂ ਹਟੇ ਸੀ ਇਹ ਮੈਂ ਬਹੁਤ ਕੁਝ ਦੇਖਿਆ ਹੋਇਆ ਇਹ ਕਿਤੇ ਸਿੱਖ ਨਹੀਂ ਇਹ ਤਾਂ ਹੋਰ ਕੋਈ ਹੈ ਤਾਨੂੰ ਨਹੀਂ ਪਤਾ ਹੋਣਾ ਇਸ ਗੱਲ ਦਾ ਇਹ ਠੀਕ ਹੈ ਬਹੁਤ سارے ਬੰਦੇ ਨੂੰ ਪਤਾ ਹੀ ਨਹੀਂ ਯਕੀਨ ਇਹਦੀ ਬੈਕਗ੍ਰਾਉਂਡ ਦਾ ਹੀ ਨਹੀਂ ਪਤਾ ਇਹ ਵੀ ਛਾਪ ਵੀ ਲਈ ਇੱਕ ਵਰਕਾ ਕਰਕੇ ਸਵਾ ਲੱਖ ਪਾਠ ਕਰਨਾ ਵਰਕਾ ਬਣ ਦੇਣਾ ਪਤਰਾ ਪਾਠ ਪਤਰਾ ਤੈਨੂੰ ਦੇ ਤੈ ਵਰਕਾ ਤੇ ਸਵਾ ਲੱਖ ਪਾਠ ਕਰਨਾ ਫੇਰ ਜਿਹੜਾ ਕਰਨੇ ਕਰਕੇ ਦਿਖਾਓ ਕਾਂ ਵੇਰਾ ਹੈ ਵੀ ਤੁਸੀਂ ਕਹੋ ਕਾਂ ਹਟੇ ਜੀ ਨਾਮ ਤਾਰੀਏ ਅਰੇ ਜਿਹੜੇ ਨੀਰ ਸਿੰਘ ਆਣ ਕੰਪਨੀ ਐ ਸਿੱਖਣੀਆਂ ਤੇ ਉਦੋਂ ਆਏ ਹਨ ਜੇ ਸਿੱਖ ਨੂੰ ਹਲਾਉਣ ਵਾਲੇ ਨੇ ਪਰ ਸ਼ਡੋਮਣੀ ਕਮੇਟੀ ਨੇ ਤਾਂ ਸਾਰੇ ਕਹਿ ਦਿੱਤੀ ਕਿ ਬੋਟਾ ਨਹੀਂ ਹੋਣਾ ਉਹਨਾਂ ਦਾ ਸਿੱਖੀ ਪ੍ਰਚਾਰ ਨਹੀਂ ਹੈ ਇਹਨਾਂ ਦਾ ਮਿਸ਼ਨ ਇਹਦਾ ਸਰ ਪ੍ਰਬੰਧ ਮਿਸ਼ਨ ਹੈ ਉਹ ਬੋਟਾਦਾਰਾ ਪ੍ਰਬੰਧ ਚੱਲੇ ਰਾਗੀ ਕਾਇਮ ਤੇ ਚੱਲੇ ਬਾਣ ਚੱਲੇ ਤਰਖਾਹ ਰਹਿਣੀਆਂ ਇਹ ਕਰਨੀਆਂ ਉਹ ਕਰਦੀਆਂ ਇਹ ਕੰਮ ਕਰਦਾ ਹੈ। ਇਹ ਕਿਸੇ ਚੀਜ਼ ਜਿਹੜੀ ਵਰਤੂ ਆ ਵੀ ਉਹ ਕਿਸ ਰੂਪ ਚ ਹੋ ਰਹੀ ਆ ਕਿ ਹਰ ਚੀਜ਼ ਦੇ ਦੋ ਪਹਿਲੂ ਹੁੰਦੇ ਨੇ। ਇੱਕ ਉਹਦਾ ਪੋਜ਼ਿਟਿਵ ਪੱਖ ਹੁੰਦਾ, ਨੈਗੇਟਿਵ ਪੱਖ ਹੁੰਦਾ। ਜਿਹੜੇ ਉਹਨਾਂ ਕੋਲ ਨਸ਼ੇ ਲੈ ਰਹੇ ਨੇ, ਜਿਹਨੂੰ ਫਾਰਮੇਸੀਆਂ ਲੱਗੇ ਜ ਦਵਾਈਆਂ ਦੀਆਂ, ਫੈਕਟਰੀਆਂ ਨੇ ਜਿਹੜੇ ਦਵਾਈ ਬਣਾਉਂਦੇ ਨੇ। ਉਹ ਸਾਰੇ ਜਿਹੜੇ ਦਵਾਈ ਦਾ ਬੱਚੇ ਨੂੰ ਮਿਦਨੇ ਆ ਜਿਹੜਾ ਨਹੀਂ ਵੀ ਸ਼ਰਾਬ ਪੀਂਦੇ ਉਹਨੂੰ ਮਿਦਨੇ ਪਰ ਉਦੋਂ ਉਹਦਾ ਕੀ ਪੱਖ ਹੋ ਗਿਆ ਫਿਰ ਚੀਜ਼ ਤਾਂ ਉਹੀ ਫਿਰ ਉਹ ਮੈਡੀਸਨ ਦੇ ਬਹੁਤ ਸਾਰੇ ਜਿਹੜੇ ਰਾਜਾ ਸੋਮੀ ਦੇ ਸਭ ਤੋਂ ਜ਼ਿਆਦਾ ਪਹਿਲਾਂ ਇਹਨਾਂ ਨੇ ਕੀਤਾ ਸਾਡੇ ਬਾਅਦ ਚ ਲੱਗੇ ਬਾਅਦ ਇਹਦਾ ਹੋੜ ਲੱਗੇ ਨੇ ਦੋ ਸਾਲ ਦੋ ਚਾਰ ਸਾਲ ਤੋਂ ਪਹਿਨ ਰਾਜਾ ਸਮਝੀ ਰਾਜਾ ਸੌਂਗੀਆਂ ਦੀ ਮੇਰੇ ਨਾਲ ਜਿਹੜੀ ਗੱਲ ਹੋਈ ਮੈਂ ਉਹ ਘੱਟ ਸਨ ਸੁਨੇਹਾ ਭੇਜੀ ਬੰਦਾ ਸੀ ਇਹ ਸਾਨੂੰ ਉਣ ਦੀ ਗੱਲ ਹੈ ਇਹ ਮਦ ਆਪ ਦੇ ਵਿੱਚ ਆਪ ਜੇ ਕਾਇਆ ਦੇ ਲਾਹਣ ਵਿੱਚ ਲਾਹੇ ਟੋਟੇ 'ਚ ਆਪ ਖੜ ਗਿਆ ਤੇ ਟੋਟਾ ਨਹੀਂ ਲਾਹੂਗਾ ਜੇ ਲਾਹੇ ਟੋਟੇ 'ਚ ਮਾਇਆ ਕਢਾ ਲਈ ਤਾਂ ਬਕਰ ਇੱਥੇ ਹੀ ਜਨ ਕਾਂ ਕ੍ਰੋਧ ਲੋਭ ਮੋਹ ਕਾਰ ਕਿ ਇਹਨਾਂ ਦੀ ਹਾਜ਼ਰੀ ਹੈ ਲਾਹੇ ਟੋਟੇ ਵਿੱਚ ਤਾਂ ਕਹਾਂ ਕਹਾਣੀ ਜੀਵਨ ਚੱਲਿਆ ਜਾਊਗਾ ਰੋਟੀ ਆਟੇ ਲੂਣ ਵੱਲੇ ਇੱਕ ਤਾਂ ਇਹ 10 ਟੋਟਾ ਦਾ ਹੋਣੀ ਹੈ ਸੰਸਾਰ ਚ ਲਾਹਾਂ ਅਟ ਜਦ ਵਪਾਰ ਕਰਦੇ ਲਾਹਾਂ ਟੋਟਾ ਦੋਈ ਚੀਜ਼ਾਂ ਹੁੰਦੀਆਂ ਵਪਾਰ ਲਾਹ ਗਈ ਟੋਟਾ ਜੇ ਦੇ ਵਿੱਚ ਆਪਮਦ ਸੱਚ ਨੂੰ ਬਣਾਈਏ ਵਿੱਚ ਸੱਚ ਰੱਖੀਏ ਕਹੇ ਤੋਟ阿里 ਉਹ ਪਹਿਲਾ ਹੈ ਫਿਰ ਗੁੜ ਦਰ ਕੇ ਉਹਨ ਕਮਜ਼ੋਰ ਬਣ ਪਹਿਲਾ ਕਮਜ਼ੋਰ ਪੈਣਗੇ ਫਿਰ ਲਗਾਤਾਰ ਜੇ ਲਗਾਤਾਰ ਕਮਜ਼ੋਰ ਪੈਂਦੇ ਚਲੇਗੇ ਖਤਰਬੀ ਹੋ ਜਾਣਗੇ ਕਿ ਐਂ ਕੋ ਵੀ ਫੂਕ ਮਾਰਨ ਦੇ ਖਤੂਜਣਗੇ ਬਿਲਕੁਲ ਨਹੀਂ ਹੁੰਦਾ ਕੋਈ ਚੀਜ਼ ਵੀ ਕਮਜ਼ੋਰ ਹੁੰਦੀ ਹੁੰਦੀ ਸਰੀਰ ਪੈਦਾ ਵੀ ਹੁੰਦਾ ਹੌਲੀ ਹੌਲੀ ਵੱਡਾ ਹੁੰਦਾ ਹੜੀ ਹੜੀ ਹੋਇਆ ਕੋਈ। ਇਹਵੇਂ ਕਨੇਜੇ ਵਧੇ ਨਹੀਂ ਕਨੇਜੇ ਘਟਦੇ। ਨਾਮਵਾਰੀ ਕਨੇਜੇ ਵਧੀਆ, ਰਹੂ ਜੇ ਇਹਦੀ ਦਵਾਈ ਚੱਲਦੀ ਰਹੇ ਘਟਾਉਣ ਵਾਸਤੇ। ਜਿਉਂ ਜਿਤੇ ਦਵਾਈ ਛੱਡ ਗਏ। ਫਿਰ ਸੰਗਤ ਸਿਉ ਮਲਾਪ ਹੋਏ। ਨੇਵ ਕਟੋਰੀ ਅਮਰਤ ਭਰੀ ਪੀਪੀ ਕਟੇ ਵਿਚਾਰ ਸਤ ਸੰਗਤ ਸਿਉ ਮਿਲਾਪ ਹੋਇ ਉਹ ਚੀਜ਼ ਨਾ ਮਿਲਦਾ ਜਿਹੜੀ ਕਦੇ ਵੀ ਨਸ਼ਟ ਨਹੀਂ ਹੋਣ ਵਾਲੀ ਸਤ ਨਸ਼ਟ ਨਹੀਂ ਹੁੰਦਾ ਕਹੇ ਦੀ ਸੰਗਤ ਹੁੰਦੀ ਹੈ ਸੱਚ ਸੱਚ ਨਾਲ ਜੁੜ ਜਾਂਦਾ ਸਤ ਸੰਗਤ ਦਾ ਮਤਲਬ ਹੈ ਸੱਚ ਸੱਚ ਨਾਲ ਜੁੜ ਜਾਂਦਾ ਸਤ ਸਰੂਪ ਜਿਹੜਾ ਜੀਵ ਹੈ ਆਪਣੇ ਮੂਲ ਸਤ ਸਰੂਪ ਨਾਲ ਜੁੜਦਾ ਸਤ ਸ੍ਰੀ ਅਕਾਲ। ਥੋੜੇ ਵਾਇਰ ਨਾਲ ਜੁੜਿਆ ਹੋਇਆ ਏ ਤਿਰਕੁਟੀ ਚ ਜਿੱਦਣ ਤਿਰਕੁਟੀ ਛੁੱਟ ਕੇ ਦਰਦਵਾਰ ਖੁੱਲ ਕੇ ਉੱਥੇ ਜਾ ਵੜਿਆ ਸਤ ਸੰਦਲ ਆਇਸਾ ਉਤਨਾ ਨਰਤੋ ਉਤਨਾ ਉਤਨਾ ਐਸਾ ਵਾਇਰ ਜੁੜ ਲਿਆ ਪਰਦੇਸ ਹੈ ਇਹ ਤੁਹੋ ਤੇ ਪਰਦੇਸ ਨਿਜਕਾਰਾ ਦਾ ਦੇਸ਼ ਕਹ ਲੋ ਇਹਨੂੰ ਨਿਜਕਰ ਨੂੰ ਨਿਰਾਕਾਰ ਦਾ ਦੇਸ਼ ਕਹੇ ਨਿਰਾਕਾਰ ਕੇ ਦੇਸ਼ ਜਾਣ ਕਾਂ ਸੁਕਲਾਏ ਮਹਲ ਅਸ ਇੱਥੇ ਨਿਰਾਕਾਰ ਦਾ ਜਿਹੜਾ ਹਾਲੰਦ ਨਿਰਾਕਾਰ ਹੈ ਹੈ ਵੀ ਨਿਰਾਕਾਰ ਜਿਹੜਾ ਇੱਥੇ ਹੈ ਇਹ ਆਪਣਾ ਕੋਲ ਮਨ ਦਾ ਨਿਰਾਕਾਰ ਹੈ ਜੀ ਪਰ ਬੋਲੋ ਅਜੀ ਆਪਣਾ ਆਪ ਨੀ ਪਛਾਣਿਆ ਇਹਨੇ ਆਪਣਾ ਆਪ ਪਛਾਣਿਆ ਹੂੰ ਆਪਣਾ ਆਪ ਜਾਣਿਆ ਨਹੀਂ ਆਪ ਆਤਮ ਗਿਆਨ ਦੀ ਇਹਨੂੰ ਐ ਲੱਗਦਾ ਵੀ ਮੈਂ ਸ਼ਰੀਰ ਹਾਂ ਸੰਗਤ ਤੋਂ ਸਾਨੂੰ ਮਿਲ ਵੀ ਸ਼ਰੀਰ ਠੀਕ ਨਹੀਂ ਆ ਜੁਵੇਰਾ ਜਦ ਇਹ ਕਹਿੰਦਾ ਮੇਰਾ ਸ਼ਰੀਰ ਨਹੀਂ ਠੀਕ ਇਹਦਾ ਮਤਲਬ ਤੂੰ ਲੱਗਦਾ ਸ਼ਰੀਰ ਵਾਲਾ ਗੱਲਾਂ ਵਾਤਾ ਜਿਹੜੀ ਹੋ ਜਾਂਦਾ ਵੀ ਤੂੰ ਸਰੀਰ ਤੋਂ ਅਲੱਗ ਹੈ ਪਰ ਫਿਰ ਵੀ अपने ਆਪਣੇ ਸਰੀਰ ਤੋਂ ਵੱਖਰਾ ਦੇਖ ਨਹੀਂ ਸਕਦਾ ਸਮਝ ਨਹੀਂ ਸਕਦਾ ਸਤ ਸੰਤਸੇ ਬਲਾਪ ਹੋਏ ਲਿਵ ਕਟੋਰੀ ਅੰਮ੍ਰਿਤ ਭਰੀ ਪੀ ਪੀ ਕਟੇ ਬਕਾਰ ਜਦੋਂ ਸਤ ਸੰਤਸ ਦੇ ਵਿੱਚ ਸੱਤ ਨਾਲ ਜੁੜਦਾ ਹੈ ਫਿਰ ਲਿਵ ਸੰਤਰਾਤ ਬੋਲੇ ਜੁੜਿਆ ਆ ਲੈ ਬਗੀ ਅੰਮ੍ਰਿਤ ਭਰੀ ਪੀ ਪੀ ਕਟੋ ਕੋਈ ਰਸਤੇ ਜੀ ਲੈ ਬਤਾ ਦੋਹਰਾ ਇਕ ਤਾਂ ਲੈ ਲੈ ਵਿੱਚ ਜੇ ਤੱਕ ਹੌਲਟ ਕਿੱਹਾ ਹੈ ਲੈ ਵਿੱਚ ਟਿਕਿਆ ਹੋਇਆ ਹੈ ਤਾਂ ਕਦੇ ਉਧਰ ਨੂੰ ਬੰਦੇ ਉਧਰ ਨੂੰ ਕਦੇ ਉਧਰ ਦਸਤਾਵ ਹੈ ਦੇ ਵਿੱਚ ਦੈਦ ਦਸਤਾਵ ਹੈ ਕਿਤੇ ਲੇਗਜੀ ਤਕਾਲ ਜੁੜਿਆ ਹੈ ਐਤੇ ਕਦੇ ਉਹੀ ਜੁੜਿਆ ਜੁੜਦਾ ਦੋ 4 ਮਿੰਟ ਕਿਤੇ 2-4 ਮਿੰਟ ਕਿਤੇ ਘੰਟਾ 2 ਘੰਟੇ ਕਿਤੇ ਕੋਈ ਟਿਕਾਣਾ ਨਹੀਂ ਪੀ ਪੀ ਕਟੇ ਦੀ ਕਟੋਰੀ ਨਾਲੇ ਦਾ ਜੁੜਦੀ ਹੈ ਸੁਰਤ ਉੱਥੋਂ ਜਦ ਸੁਰਤ ਸ਼ਬਦ ਨਾਲ ਜੁੜਦੀ ਹੈ ਉੱਥੋਂ ਗ੍ਰ ਪ੍ਰਕਾਰ ਹੁੰਦੇ ਨੇ ਜਿਹੜਾ ਰਸ ਮਿਲਦਾ ਸ਼ਬਦ ਵਿਚਾਰ ਜੋ ਜਿਹੜਾ ਰਸ ਮਿਲਦਾ ਹੈ ਸਟੇਜ ਦੇ ਵਿੱਚ ਜੇ ਕੁਰਬਾਨੀ ਨਾਲ ਜੁੜਿਆ ਰਹਿੰਦਾ ਅੰਦਰੇ ਵਿਚਾਰ ਦਾ ਰਹਦਾ ਜੋ ਸਮਝ ਆਉਂਦੀ ਹੈ ਉਹਦੇ ਨਾਲ ਕੋਕਾਰ ਕੱਟਦੇ ਰਹਿੰਦੇ ਤੇ ਕਹਿੰਦਾ ਇਸ ਮਟਕੀ ਨਾਲ ਅੰਮ੍ਰਿਤ ਸੰਜੋਈ ਨਾ ਅੰਮ੍ਰਿਤ ਕਿਆ ਸ਼ਬਦ ਸੁਣੋ ਸ਼ਬਦ ਸੁਣੋ ਇਸ ਮਟਕੀ ਨਾਲ ਸ਼ਬਦ ਫਿਰ ਆਪੇ ਵੀ ਸਮਝ ਆਉਣ ਲੱਗਦੀ ਹੈ ਜਦ ਅਸੀਂ ਉੱਪਰ ਚਲੇ ਦੇ ਜਿਹੜੇ ਗ੍ਰੰਥ ਨੇ ਇਹਨਾਂ ਦੀ ਬੁੱਧੀ ਤੇ ਜਾਂ ਸਾਡੀ ਬੁੱਧੀ ਉੱਚੀ ਹੋ ਜਾਊ ਫਿਰ ਆਪੇ ਨੇ ਆ ਕੀਤਾ ਉਹ ਕੀਤਾ ਉਹ ਕੀਤਾ ਯਾ ਇਹ ਹੋ ਗਿਆ ਯਾ ਹੋ ਗਿਆ ਗਲਤ ਇਹਦਾ ਪਤਾ ਲੱਗਣ ਲੱਗ ਜਾਂਦੇ ਜਾਂ ਉੱਚਾ ਖੜਦਾ ਹੋ ਕਹਿੰਦਾ ਆ ਇਧਰੋਂ ਇਹਨੂੰ ਚਲੇਗਾ ਤੁਸੀਂ ਇਹਨੂੰ ਹੋਣਾ ਸੀ ਬਸ ਚਲੋ ਬੈਠਾ ਜਾਇਓ ਉਹ ਕੋਤੜ ਦੇਖੇ ਇਹ ਘਰ ਘਰ ਹਾਲ ਆਹੋ ਆਪੇ ਸੁਰ ਆਪੇ ਖਟ ਦਰਸ਼ਨ ਕੀ ਬਾਣੀ ਆਪੇ ਸੁਰ ਨਾਰ ਹੋਵੇ ਜੋਤ ਆਪੇ ਆਪੇ ਇੱਕ ਵਾਸਤੇ ਆਇਆ ਹੈ ਜਿਹੜਾ ਆਪੇ ਲੱਭਦਾ ਇੱਕ ਵਾਸਤੇ ਹਰ ਇੱਕ ਦੇ ਵਿੱਚ ਕੋਈ ਜਾਂ ਜੋਤ ਇੱਕਾ ਜਿਹੜਾ ਦੋਸ ਚੱਜ ਹੋਇਆ ਹੈ ਦੂਰੇ ਸਿਆਲਾ ਕੋਈ ਜ਼ੋਰਾ ਕੋਈ ਧਾਰਾ ਕੋਈ ਜਾਣੇ ਕੋ ਕੋਨਰ ਬੈ ਮੈਂ ਨਹੀਂ ਗਿਆਨੀ ਮੈਂ ਨਹੀਂ ਬੰਣਾ ਬਰੋਂਗ ਸਾਰਿਆਂ ਚ ਹੈ ਉਹਦਾ ਕੋਈ ਰੋੜਾ ਬਰ ਮੱਦਦਾ ਹੁੰਦਾ ਸਾਫਤ ਨਹੀਂ ਹੁੰਦਾ ਬਰ ਮਗਾਨੀ ਸਾਫਤ ਹੁੰਦਾ ਬਰ ਹੁੰਦਾ ਅੱਦਾ ਕਰਕੇ ਤਾਂ ਪ੍ਰਭੂਲੀ ਰੋਡ ਸਾਬਤ ਵੀ ਤਾਂ ਕੋ ਰੜੇ ਨਹੀਂ ਸਕਦਾ ਇੱਕ ਜੀ ਨਹੀਂ ਕੋ ਰੜਨ ਹੁੰਦਾ ਨਾ ਇੱਕ ਕਿਸੇ ਜੀ ਰੜਦਾ ਇਹ ਨਾ ਕੁਝ ਕੋ ਰੜਦਾ ਬ੍ਰਹਮ ਅੱਦਾ ਹੈ ਬ੍ਰਹਮ ਗਿਆਨੀ ਸਾਬਤ ਹੈ ਬ੍ਰਹਮ ਜਮਾ ਗਿਆਨੀ ਵਰ ਗਿਆਨੀ ਹੋ ਗਿਆ ਬ੍ਰਹਮ ਪਹਿਲਾ ਹੈਗਾ ਇਹ ਹੈ ਗਿਆਨवान ਹੋ ਕੇ ਮਨ ਬਾਹਰੋਂ ਛੱਡ ਕੇ ਅੰਦਰ ਜਾਉਣ ਉਹਦੇ ਨਾਲ ਜੁੜ ਗਿਆ ਸਤ ਸੰਗਤ ਹੋਊਗੀ ਖੋਗੇ ਅਪੇਸ਼ਾਨੀ ਕਾ ਕਥਾਰੇ ਜਾਏ ਅਦਾ ਅਦਾ ਜੀ ਅਦਾ ਬ੍ਰਹਮ ਦੇ ਕਥਾਰੇ ਬ੍ਰਹਮਚਾਰ ਬ੍ਰਹਮ ਵਿਚਾਰ ਹੈ ਸਾਰੀ ਬਾਣੀ ਲੋਕ ਕਹੇ ਗੀਤਾ ਹੈ ਤਾਂ ਬ੍ਰਹਮਚਾਰ ਜਿਹੜਾ ਅਦਾ ਅਖਰ ਲਫਜ਼ ਆਇਆ ਅਖਰ ਕਿਦੇ ਵਾਸਤੇ ਆਇਆ ਬ੍ਰਹਮ ਵਾਸਤੇ ਬ੍ਰਹਮ ਦੇ ਸਾਬਤ ਕਿਤੇ ਜਿੱਦਣ ਜੇ ਤੁਸੀਂ ਇਹ ਸਾਬਤ ਕਰ ਸਕਦੇ ਹੋ ਬ੍ਰਹਮ ਅੰਦਾ ਹੈ ਗੁਰਬਾਣੀ ਕਿਉਂ ਹਿੰਦੂਇਜ਼ਮ ਸਾਰੇ ਗੱਲ ਉਹਨਰਵ ਬ੍ਰਹਮ ਤੋਂ ਬਿਨਾਂ ਉਹ ਕਹੇ ਕਿ ਅਧਿਕਰ ਬ੍ਰਹਮ ਹਦਾ ਇਸ ਕਰਕੇ ਅੰਦਾ ਕਰਕੇ ਪੂਰਨ ਬ੍ਰਹਮ ਲੱਗਦਾ ਬਣਦਾ ਪੂਰਨ ਬ੍ਰਹਮ ਜਦ ਜਦ ਦਾ ਬੂਟਾ ਪੇੜ ਬਣਦਾ ਫਿਰ ਪਾਰਤੋ ਉਹ ਬ੍ਰਹਮ ਸਾਗਤ ਹੋ ਗਿਆ ਨਾ ਇਹ ਕੋਈ ਤਾਂ ਉਗ ਵੈ ਉਗ ਵੈ ਹੋ ਕੇ ਬਰ ਬਰ ਹਾਂਜੀ ਬ੍ਰਹਮ ਬ੍ਰਹਮ ਬ੍ਰਹਮ ਉਹ ਰੋਗ ਬ੍ਰਹਮ ਪੂਰਨ ਬ੍ਰਹਮ ਪੂਰਨ ਬ੍ਰਹਮ ਤੋਂ ਪਪੈਦਾ ਬ੍ਰਹਮ ਗਿਆਨੀ ਸਰਵ ਹਾਂ ਇਹ ਵੀ ਬ੍ਰਹਮਤ ਦਾ ਹੀ ਹੈ ਕਿਹ ਗਿਆਨੀਆਂ ਨਾਲ ਲੱਗਿਆ ਹੁੰਦਾ ਹੈ ਪੂਰਾ ਬ੍ਰਹਮ ਗਿਆਨੀ ਦਾ ਪੂਰਾ ਹੁੰਦਾ ਪਰ ਉਹ ਕਹਿੰਦੀ ਨਹੀਂ ਨਾਲ ਹੈਗਾ ਉਹ ਗਿਆਨੀ ਹੋ ਕੇ ਜਿੱਦਾਂ ਜਿਹੜਾ ਗਿਆਨੀ ਸੀ ਉਹਦਾ ਜੜਦਾ ਸੀ ਨਾ ਗਿਆਨਤਾ ਦੀ ਲੜਾਈ ਸੀ ਉਹਦਾ ਜਰ ਸੋਲਦੀ ਸੀ ਮਿਲਦੀ ਤੋਂ ਹੁੰਦੀ ਗਿਆਨ ਹੋ ਗਿਆ ਹੋ ਗਿਆ ਪਰ ਬੜੀਗੀ ਉਹ ਗਾਣੇ ਦੋ ਹਨ ਜਾਨਾਂ ਦੇ ਹਨ ਇਹ ਸੰਤਾਂ aur ਜਾਨ ਦੋ ਨੇ ਇਤਨੀ ਹੈ ਜਿਹੜੇ ਇੱਕ ਖਸਾਬਤ ਹੋ ਗਿਆ 2000 ਅੱਧਾ ਅੱਧਾ ਦੋਏ ਤੇ ਤੇਰੇ ਸੰਤਾਂ aur ਜਾਨਾਂ ਤੇ ਦੋ ਜਾਨਾਂ ਤਾਂ ਇਹ ਤਾਂ ਹੰਨ ਕੇ ਸੰਤ ਆਪਾ ਬਾਹਰਲਾ ਜਾਨ ਸੰਤ ਜਾਨ ਸਤ ਜਨਾਬ ਹੈ ਨਾ ਅਰਜਾਇਸ ਲਾਇਓ ਲੋਏ ਬੜ ਕੇ ਅਰਜਾਇਸ ਮੋਦ ਜੇ ਦੋਰੇ ਕਾਹੀ ਮਿਲ ਆਇਆ ਲਾਹੂ ਵਿੱਚ ਅਜੇ ਤਾਂ ਬੜੀ ਇਹ ਗੱਲ ਆ ਵੀ ਕਿਸਾਨ ਤਾਂ ਬਾਕੀ ਸੰਗ ਤਾਂ ਬੜ ਕੇ ਕੱਲੇ ਕੱਲੇ ਨਹੀਂ ਗਿਆ ਹੈ ਨਾ ਕੱਲੇ ਕੱਲੇ ਅਰਜਾਇਸ ਜਿਹੜਾ ਗਿਆ قربਾਨੀ ਜੇ ਲਾਓ ਉੱਥੇ ਕਰੋਗੇ ਤਾਂ ਜਿਹੜਾ ਗਾਇਨ ਕੀਤਾ ਹੈ ਸੰਤ ਜਨਾਂ ਨੇ ਮਿਲ ਕੇ ਕੀਤਾ ਅੰਦਲਾ ਸੰਤਾਂ ਦਾ ਵਾਹ ਲੈ ਜਾਂਦੇ ਹਰ ਅਵਰਣ ਕੀਤਾ ਨਹੀਂ ਹੋਇਆ ਇਕੱਲੇ-ਇਕੱਲੇ ਦਾ ਨਹੀਂ ਲਿਖਿਆ ਹੈ ਇਕੱਠੇ ਉਹ ਤਾਂ ਲਿਖਿਆ ਨਹੀਂ ਇਹਦੇ ਕੋਈ ਛੱਤੀ ਆਸ ਨੂੰ ਬੈਠੀ ਇਕੱਠਿਆਂ ਨੇ ਲਿਖੇ ਕੁਝ अपने अपने मतलब अपने को भी साधारण जान और संत अलग है दान को संत मिला सच पर सच पर क्यों वेले सब जल्दी हो जाए सर तक संत के नुवेले जल्दी हो जाए दोस्तों केड़ा संत मिले है बाहर है संत ਆਹ ਹੁਣ ਗਾਤਾ ਬ੍ਰਹਮ ਸੰਤ ਤੇ ਬ੍ਰਹਮ ਸੰਤ ਤੇ ਆਪੇ ਸ਼ਿਵ ਆਪੇ ਸ਼ਿਵ ਸ਼ੰਕਰ ਮਹੇਸ਼ਾ ਆਪੇ ਗੁਰਮੁਖੀ ਕਥਾ ਕਹਾਣੀ ਆਪੇ ਸ਼ਿਵ ਸ਼ੰਕਰ ਮਹੇਸ਼ਾ ਸ਼ੰਕਰ ਮਹੇਸ਼ਾ ਇਹ ਜਿਹੜਾ ਇੱਕ ਤੋਂ ਅੱਧਾ ਬਣਦਾ ਨੇ ਆਪੇ ਬਣਦਾ ਆਪੇ ਜਨ ਬਣਦਾ ਆਪੇ ਲੱਭ ਜਿਹੜੇ ਆਪੇ ਬਣਨੀ ਹੈ ਜੇ ਸ਼ਿਵ ਬਣਦਾ ਤਾਂ ਵੀ ਇੱਕ ਤਾਂ ਹੀ ਬਣਦਾ ਸ਼ੰਕਰ ਬਣਦਾ ਤਾਂ ਵੀ ਇੱਕ ਤਾਂ ਹੀ ਬਣਦਾ ਹੀਰਾ ਦਾ ਸ਼ਿਵ ਹੈ ਉਹ ਸ਼ਿਵ ਉਹ ਨਹੀਂ ਹੈਗਾ ਸ਼ਿਵ ਕੇ ਕਰਤਾ पे ਦੇਖੋ ਇੱਥੇ ਵੀ ਵਰਪਨ ਜੇ ਸ਼ਿਵ ਸ਼ੰਕਰ ਲਗਤਾ ਨਾਲ ਕਹਿਣਾ ਸ਼ਿਵ ਸ਼ੰਕਰ ਸ਼ੰਕਰ ਆ ਗਿਆ ਨਾ ਆਪੇ ਸ਼ਿਵ ਸ਼ਿਵ ਹੈ ਸ਼ਿਵ ਦੇਖੋ ਸ਼ਿਵ ਦੇ ਨਾਲ ਸ਼ਿਵ ਦੇ ਨਾਲ ਸ਼ੰਕਤਾਂ ਲੱਗਿਆ ਸ਼ਿਵੰਦਲਾ ਹੋ ਗਿਆ ਸ਼ੰਕਰਵਾਹ ਲਾ ਹੋ ਗਿਆ ਸ਼ੰਕਵਾਦੀ ਹੈ ਜਿਹੜਾ ਅੱਛਾ ਦੌਰੂ ਦੌਰੂ ਸ਼ੰਕਤਾਂ ਹੋਰ ਸ਼ੰਕਰ ਦੇ ਪੋੜੇ ਨੇ ਦੌਰੂ ਦੌਰੂ ਨਹੀਂ ਹੈ ਅਸਲ ਵਿੱਚ ਕੋਲ ਦਬਾਵਾ ਹੈ ਸ਼ਿਵ ਸ਼ੰਕਰ ਕੋਲ ਦੌਰੂ ਹੈ ਜੇ ਵਰ ਸ਼ੰਕਰ ਦੋਗੇ ਨਾ ਡਰੋ ਡਰੋ ਉਹਦੇ ਕੋਲ ਤੋਂ ਡਰੋ ਬਈ ਆਪੇ ਸ਼ਿਵ ਸ਼ੰਕਰ ਦਾ ਨਾਮ ਡਰੂ ਹੈ ਆਪੇ ਗੁਰਮੁਖੀ ਕਾਤ ਕਹਾਣੀ ਬੇਸ਼ੇ ਬੇਸ਼ੇ ਮੇਸ਼ਾ ਕੀ ਮੇਸ਼ਾ ਦਾ ਜੀ ਬੇਸ਼ੇ ਉਹ ਮਤਲਬ ਆ ਆਪੇ ਗੁਰਮੁਖੀ ਇੱਕ ਕਹਾਣੀ ਜਿਹੜੇ ਪਹਾੜ ਕੀ ਹੁੰਦਾ ਪੀਸ ਰ ਮੇਜ਼ ਇਸ ਸਰ ਜਿਹੜਾ ਰਾਜੇ ਨੂੰ ਕਹਿੰਦੇ। ਇਸ ਸਰ ਤੋਂ ਇਹ ਬਣਾ ਕਿਸ਼ੋਰ ਹੁੰਦਾ। ਇਸ ਸਰ ਤੇ ਰਾਜੇ ਨੇ ਨਾ ਉਹਨਾਂ ਤੋਂ ਵੱਡਾ ਜਿਹੜਾ ਰਾਜਾ ਹੁੰਦਾ ਜਿਵੇਂ ਗੁਰ ਗੁਰ ਹਾਈ ਮਹੇਸ਼ਵਰ ਜੀ। ਉਹਨਾਂ ਜੋ ਆਗੂ ਉਹਨਾਂ ਜੋ ਆਗੂ ਜਦੋਂ ਆਪਣੇ ਬਣਾ ਲੈਣ ਜਾਂ ਹੋ ਗਿਆ ਜਾਂ ਹੋਰ ਕੋਈ ਲਫ਼ਜ਼ ਹੋ ਗਿਆ। ਐਮ ਐਮ ਹੈ ਜਿਹਦੇ ਦਾ ਹਾਂ ਕੇਲੇ ਹੋ ਗਏ ਉਹ ਮਹਿਜ ਬਣ ਗਿਆ ਇਹ ਆਪੇ ਉਹ ਜੀਵਾਸ ਤੇ ਲੱਗ ਰਿਹਾ ਹੈ ਤੇ ਆਪੇ ਸ਼ਿਵ ਜੀ ਕਰਮੇਸ਼ਾ ਚਲੋ ਇਹਦਾ ਛੰਕਾ ਦੇਖ ਮੈਂ ਕਹਿੰਦਾ ਛੰਕਾ ਥੋੜੀ ਲਕਣੀ ਇਹਦੇ ਨਾਲ ਦੇਖਣਾ ਵੀ ਇਹੀ ਅਰਥ ਬਣਦਾ ਜਾਂ ਕੁਝ ਹੋਰ ਬਣਦਾ ਜੇ ਮੈਂ ਕਹਿੰਦਾ ਕਿਸ ਗਰਾਉਂਡ ਤੇ ਹੈ ਗਰਾਉਂਡ ਕੀ ਹੈ ਮੈਨੂੰ ਕਹਿਣ ਦੀ ਸਾਰਾ ਤਾਂ ਇਸ ਗੱਲ ਦਾ ਹੂੰ ਹੂੰ ਹੁਣ ਇਹ ਜਿਹੜੀ ਗੱਲ ਆ ਸਾਰੇ ਤੇ ਲੋਕ ਦੀ ਹੈ ਤੁਹਾਨੂੰ ਤੇ ਲੋਕ ਤੇ ਸ਼ਿਵ ਸ਼ੰਕਰ ਮਹੇਸ਼ਾ ਉੱਥੇ ਤਾਂ ਹੈ ਨਹੀਂ ਕੋਈ ਸੱਚ ਕਰਨ ਇੱਥੇ ਤਾਂ ਇੱਕ ਜੋ ਨਾਲੇ ਹੈ ਤੇ ਹੋਰ ਕੀ ਹੈ ਇੱਥੇ ਹੀ ਦਾ ਦੋ ਜਹਾਜ਼ਾਂ ਨੂੰ ਬਖਰਾ ਕੋਈ ਥਿਆਲੇ ਨੂੰ ਬਖਰਾ ਰੱਖੋ ਇਹ ਸਾਰੇ ਇੱਥੇ ਹੀ ਆਉਣਗੇ ਇੱਥੇ ਜੋ ਸਰ ਇੱਥੇ ਹੀ ਨੇ ਸਾਰੇ ਉੱਥੇ ਤਾਂ ਹੀ ਨਹੀਂ ਕੋਈ ਉੱਥੇ ਹੀ ਬੈਠੇ ਰਹੇਗੇ ਇਹ ਸ਼ੰਕਰ ਵਾਤਰ ਖੋਥੇਰੇ ਇੱਥੇ ਦੀ ਇੱਥੇ ਜੋ ਹੈ ਇੱਥੇ ਜਿੱਡ ਜੋਤ ਇੱਥੇ ਉਸੇ ਦੀ ਗੱਲ ਹੈ ਆਪੇ ਸ਼ਿਵ ਸ਼ੰਕਰ ਮਹਾਂਸ਼ਾਹ ਉਹਦਾ ਹੁਕਮ ਆਉਂਦਾ ਸਿਰਫ ਕਲੈਕਟਿਵ ਸਾਰਿਆਂ ਦਾ ਇਕੱਠਾ ਆਵਾਜ਼ ਦੇ ਰੂਪ ਚ ਉਹ ਵੀ ਹਿਰਦੇ ਚੱਕੇ ਸੀਂਦਾ ਹਿਰਦੇ ਤੋਂ ਬਾਹਰ ਦੀ ਹੂੰ ਇਹ ਵੀ ਐਚ ਜੇ ਨੀ ਬਹਿਲਾ ਚੇਨ ਤੱਕੇ ਬਸ ਐਚ ਜੇ ਤੋਂ ਪਰੇ ਨਹੀਂ ਜਾਂਦੇ ਉਹਨੇ ਮੈਸੇਜ ਐਚ ਜੇ ਤੱਕ ਉਹਦੋਂ ਕਹਾ ਪਾਸ ਹੋਰ ਫਿਰ ਹੋਰ ਕਰੇ ਆਪੇ ਗੁਰਮੁਖੀ ਇੱਕ ਕਹਾਣੀ ਐਚ ਜੇ ਦੇ ਕਹਾ ਅਸੀਂ ਤਾਂ ਐਚ ਤੇ ਜਾਣਾ ਪੈਣਾ ਡਾਇਰੈਕਟ ਨਹੀਂ ਤੁਸੀਂ ਜਾ ਸਕਦੇ ਜਾਣਾ ਚੇਨ ਚ ਪੁੱਲਦਾ ਪਹਿਲੋ ਉਹ ਵੀ ਅਚੈਂਜ ਦੇ ਰੂਹ ਦੇ ਅਸੀਂ ਅਚੈਂਜ ਸੰਪਰਕ ਤੋਂ ਐਕਚੈਂਜ ਦੇ ਰੂਹ ਤੂੰ ਜੇ ਅਚੈਂਜ ਕਰਕੇ ਚਲੋ ਅੰਦਰ ਹਰ ਦਾ ਚੇਂਜ ਹੈ ਨਹੀਂ ਕਿ ਪਛਾਹ ਤੋਲਣਾ ਦਾ ਮੈਸੇਜ ਤਾਂ ਚੈਂਜ ਸਾਡਾ ਮੈਸੇਜ ਐਕੀਨ ਸਿੰਘ ਹੈ ਇਧਰ ਚੀਜ਼ ਉਧਰ ਨਹੀਂ ਉਧਰ ਹੋ ਜਦ ਲਈ ਇਹ ਦਲਾਂ ਦੀ ਆ ਪਿਛਲਾ ਮੈਸੇਜ ਕੇ ਭੇਜਣਾ ਉਧਰਾ ਉਧਰ ਉਧਰਾ ਉਧਰ ਉਧਰਾਂ ਵਾਲ ਉਧਰ ਉਧਰ ਉਧਰਾ ਉਧਰ ਬ੍ਰਹਮ ਦਾ ਕੰਮ ਹੈ ਬ੍ਰਹਮ ਇਧਰ ਵੀ ਜੁੜਿਆ ਹੈ ਜੀਵ ਨਾਲ ਉਹ ਉਧਰ ਪਿੱਛੇ ਵੀ ਜੁੜਿਆ ਹੈ ਜੀਵ ਤਾਂ ਬ੍ਰਹਮ ਨਾਲ ਵੀ ਜੁੜਿਆ ਹੋਇਆ ਸੁਰਲੰ ਦਾ ਉਹਦੀ ਗੱਲ ਏ ਥੋੜੀ ਜਾਂਦੀ ਪਰ ਜੁੜਿਆ ਹੋਇਆ ਨਹੀਂ ਹੈ। ਬਸ ਐਵੇਂ। ਆਪੇ ਗੁਰਮੁਖੀ ਕਿਸੇ ਤੋਂ ਤੁਹਾਨੂੰ ਮਿਲ ਜਾਂਦਾ ਹੈ। ਪਰ ਜੁੜਿਆ ਹੋਇਆ ਜਿਹਨੂੰ ਐ ਦੇ ਤੋਂ ਮੈਸੇਜ। ਹੁੰਦਾ ਨਹੀਂ ਨੂੰ। ਉਹੀ ਗੱਲ ਏ ਆ। ਆਪੇ ਗੁਰਮੁਖੀ ਇਕੱਤ ਕਹਾਣੀ ਬਰਾਬ ਜਾਲੇ ਕਰਾਈ ਜਾਂਦਾ ਸਾਨੂੰ ਆਪੇ ਗੁਰਮੁਖੀ ਇਕੱਤ ਕਹਾਣੀ ਇਕੱਤ ਆਪੇ ਕੀ ਸਿਰ ਆਪੇ ਸ਼ਿਵਸ਼ੰਕਰ ਮਹਿਸ਼ਾ ਆਪੇ ਬੇਟਾ ਜੀ ਅੰਦਰ ਮਹਿਸ਼ਾ ਆਪੇ ਦਾ ਵੱਡਾ ਨੇ ਉਹ ਕਹਾਣੀ ਕੀਤੀ ਆ ਇਕੱਤ ਸਭ ਉਹਦਾ ਕਤ ਸੰਸਾਰ ਦਾ ਕੱਤ ਕਹਾਣੀ ਕੀ ਹੈ ਗੁਰੂ Gandhi Raja Ram ਕੀ ਕਹਾਣੀ ਇਕੱਤ ਕਹਾਣੀ असल सारे जो हो रहा बापर है सबको दस्ता कौन है कौन है फेस बदली फिरदा सारे सीआईडी देती हां फिर कौन है जोकी कौन है सारे सीआईडी देती गुरु बेरी बस समझणा ना समझणा जेड़े समझण वाले होंगे समझ जानगे आपे जोगी, आपे पूज म ਆਪੇ ਜੋਗੀ ਆਪੇ ਭੋਗੀ ਆਪੇ ਸਮਿਆਸੀ ਆਪੇ ਭੋਗੀ ਹੈ ਇਹ ਜੋਗੀ ਵੀ ਇਹੀ ਰਹਿੰਦਾ ਭੋਗੀ ਵੀ ਰਹਿੰਦਾ ਪਹਿਲਾਂ ਭੋਗੀ ਹੁੰਦਾ ਜੋਗੀ ਵੀ ਬਣ ਜਾਂਦਾ ਆਪੇ ਸਿੱਧਾ ਜੋਗੀ ਬਣ ਜਾਂਦਾ ਉਹ ਜੋਗੀ ਹੋ ਕੇ ਕੋਈ ਵੱਖਰਾ ਨਹੀਂ ਬਣ ਗਿਆ ਉਹ ਸੀ ਡਿਵੈਲਪ ਹੋ ਗਿਆ ਛੱਡ ਜੋਗੀ ਬਣ ਕੇ ਸੰਸਾਰ ਕੋਈ ਬਹੁਤ بڑا ਨਹੀਂ ਹੋ ਜਾਂਦਾ ਰੱਬ ਨਹੀਂ ਬਣ ਜਾਂਦਾ ਜੋਗੀ ਬਣ ਕੇ ਰੱਬ ਨਹੀਂ ਬਣ ਗਿਆ ਉਹ ਵੀ ਬਣ ਗਿਆ ਕੋਈ ਹੋਰ ਨਹੀਂ ਬਣ ਗਿਆ ਉਹ ਔਗਣ ਸੀਗਾ ਉਹ ਗੁਣਵੰਤਾ ਹੈ ਡਰੀ ਬਣਦਾ ਇੱਕ ਔਗਣ ਆ ਗੁਣਵੰਤਾ ਖੋਟਾ ਘਰਾਈਆ ਹੋ ਕੁਝ ਨਹੀਂ ਜੇ ਭੋਗੀ ਹੈ ਤੇ ਖੋਟਾ ਜੇ ਜੋਗੀ ਹੈ ਖਰਾਬ ਹੋ ਗਿਆ ਹੈ ਆਪੇ ਹੈ ਉਹ ਹੀ ਉਸੇ ਦੀ ਖੋਟ ਨਿਕਲਦੀ ਹੈ ਸਤਿਗੁਰੂ ਖੋਟੋਂ ਖਰੇ ਕਰੇ ਬਸ ਪਰ ਹੋਰ ਕੀ ਹੈ ਸਤਿਗੁਰੂ ਖੋਟੋਂ ਖਰੇ ਕਰੇ ਭੋਗੀ ਖੋਟਾ ਜੋਗੀ ਖਰਾ ਹੈ ਹੈ ਦੌੜੀ ਦੇ ਇਸ ਹੋ ਗਿਆ ਤੁਸੀਂ ਵੀ ਹੋ ਸਕਦੇ ਭਰਮ ਘੱਟਿਆ ਆਪਸ ਵਿੱਚ ਜਿਹੜਾ ਸੀ ਜਿਹੜੇ ਗੁਰੂ ਬਣੇ ਹੋਏ ਤੇ ਦੂਰੀ ਮਟਾਈ ਦੂਰੀ ਮਟਾ ਹਾਂ ਦੂਰੀ ਤਾਂ ਨਹੀਂ ਮਟਾਈ ਦੂਰੀ ਹੋਰ ਗੱਲ ਹੈ ਅਕਲ ਦਾ ਜਿਹੜਾ ਫੇਰ ਸੀ ਉਹ ਬਟਾਇਆ ਜਿਹੜਾ ਅਸੀਂ ਸਮਝਦੇ ਸੀ ਵੀ ਪਤਾ ਨਹੀਂ ਉਹ ਜਿਹੜਾ ਹੈਗਾ ਬਲਕਿ ਆਪਣਾ ਵੀ ਪਰ ਮਟਾਉਂਦੇ ਨੇ ਵੀ ਸਾਨੂੰ ਕੋਈ ਬਹੁਤਾ ਬੜਿਆ ਨਾ ਤੁਸੀਂ ਬੰਦੇ ਵਰਮਖਾਨੇ ਲਿਖਿਆ ਉਹ ਬਹੁਤਾ ਬੜੀ ਫਰਕ ਨਹੀਂ ਕਿ ਇਹ ਰੱਖੀ ਵੀ ਤੁਸੀਂ ਹੋਈ ਨਹੀਂ ਸਕਦੇ ਕਿੰਨੀ ਗੁਰਬਾਣੀ ਦੇ ਤੁਹਾਨੂੰ ਹੌਸਲਾ ਦਿੰਦਾ ਵੀ ਸਾਰੀ ਹੋਸਾ ਕੋਈ ਕਾਲ ਕੱਲ ਖਾਣੀ ਹੈਗੀ ਸੰਤਰੀ ਗੇਤੋਂ ਕਰਦੇ ਆਹੋ ਸੰਤਰੀ ਆਪੇ ਸੰਿਆਸੀ ਫਿਰੇ ਚੇਲਾ ਹੀ ਰੱਖਣਗੇ ਜੇ ਉਹਨੂੰ ਤਾਂ ਖਤਰਾ ਪੈਗਾ ਜੀ ਉਹ ਚੇਲੇ ਕਰਨਾ ਝੜਦੇ ਉਹ ਬਰਾਬਰ ਦਾ ਨਹੀਂ ਬਣਾ ਤੇ ਰਾਜੀ ਸਾਧਾ ਪਰ ਬਰਾਬਰ ਦਾ ਬਣਦੇ ਜਿਵੇਂ ਸਾਧਗਤਾਂ ਦੀ ਬਣਾ ਦੇਣਾ ਜੀ ਸਾਧਗਤਾਂ ਨਾਲ ਸੰਤ ਕੋਈ ਗੱਲ ਨਹੀਂ ਜਿਹੜਾ ਦੁਨਿਆਵੀ ਵਿੜਿਆਈ ਚੋਂ ਕਦੇ ਨਹੀਂ ਬਰਾਬਰੀ ਦੀ ਅੱਤਲ ਹੁਰਦੂਗਾ ਸੰਸਾਰੀ ਵਿੜਿਆਈ ਜ ਆਪਣੇ ਬਰਾਬਰ ਨਹੀਂ ਕੋਈ ਵੀ ਚੋਂ ਦਾ ਹੋ ਜੇ ਇਧਰ ਵਿੜਿਆਈ ਜੋ ਹੋ ਜਾਣ ਵਾਹਿਗੁਰੂ ਬਸ ਇੰਨੇ ਵਰਤ ਕਹਿੰਦੇ ਘੱਟਾ ਵਾਧਾ ਨਹੀਂ ਕੋਈ ਹੈਗਾ ਉਹਨਾਂ ਨੂੰ ਕੋਈ ਫਰਕ ਪੈਂਦਾ ਜੇ ਤੈਨੂੰ ਵੈਟੀ ਉੱਥੇ ਫਰਕ ਪੈਂਦਾ ਉੱਥੇ ਸਾਰਿਆਂ ਨੂੰ ਬੜਾ ਵੱਡਾ ਇਧਰ ਸਾਰਿਆਂ ਨੂੰ ਛੋਟਾ ਵੱਡਾ ਇੰਦਰ ਛੋਟਾ ਬਣਦਾ ਉਧਰ ਬੜਾ ਬਣਦਾ ਇੱਕ ਛੋਟਾ ਹੀ ਹੁੰਦਾ ਸਭ ਤੋਂ ਛੋਟਾ ਇੱਕ ਆਪੇ ਨਾਲ ਗੋਸਟ ਹਾਂ ਆਪੇ ਨਾਲ ਗੋਸਟ ਆਪ ਅਵਦੇਸ਼ਾ ਆਪੇ ਛੋਟੀ ਜਿਹੜੀ ਕੋਸ਼ਿਸ਼ ਕਰਨੀ ਹੈ ਆਪਣੇ ਨਾਲ ਕਰਨ ਆਪੇ ਨਾਲ ਕਰਨੀ ਚਾਹੀਦੀ ਹੈ ਦੂਜੇ ਨਾਲ ਨਹੀਂ ਬਹੁਤੀ ਲੋਡ ਕਰਨ ਦੂਜੇ ਨਾਲ ਕਿਤੇ ਕਿਤੇ ਰੋਣਾ 24 ਘੰਟੇ ਆਪਣੇ ਨਾਲ ਲੋਡ ਹੈ ਕੋਸ਼ਿਸ਼ੀ ਕਰ ਆਪੇ ਨਾ ਆਪੇ ਨਾ ਆਪੇ ਨਾ ਕਰ ਮੈਂ ਆਪੇ ਨਾਮਾ ਸੱਲ ਹਾਂ ਆਪ ਉਪਦੇਸ਼ ਹੈ ਤੂੰ है ਕੀ ਹੈ ਕੀ ਕਰਨਾ ਆਇਆ ਸੀ ਤਿੱਦ ਨੂੰ ਉਹ ਚੱਕ ਲਿਆ ਔਰ ਪਾਸੇ ਹਮ ਆ ਨੂੰ ਇਹਨੂੰ ਗੋਸ਼ਟੀ ਆਪ ਉਪਦੇਸ਼ ਹੈ ਆਪਣੇ ਆਪ ਨੂੰ ਆਪ ਹੀ ਉਪਦੇਸ਼ ਦੋ ਦਿਨ ਨਹੀਂ ਗਲੋੜਾ ਵੀ ਅੱਖਰਾਂ ਦੀ ਸਮਝ ਨਹੀਂ ਆ ਗਈ ਲੱਭ ਜਾਂਦੀ ਸਮਝ ਨਹੀਂ ਆ ਅਰਥਾਂ ਦੀ ਸਮਝ ਨਹੀਂ ਆ ਕੋਈ ਨਹੀਂ ਗਲੋੜਾ ਸਮਝ ਕੇ ਤਾਂ ਫਿਰ ਅਫਡੇ ਨਾਲ ਕੋਸ਼ਿਸ਼ ਕੀ ਹੈ ਇੰਨੀ ਗੱਲ ਹੈ ਤਾਂ ਸਮਝ ਨਹੀਂ ਆ ਅੱਖਰਾਂ ਦਾ ਵੀ ਲਫ਼ਜ਼ਾਂ ਦਾ ਪਤਾ ਨਹੀਂ ਸੀ ਅਰਥਾਂ ਦਾ ਪਤਾ ਨਹੀਂ ਸੀ ਭਾਸ਼ਾ ਲਿਖੀ ਹੋਈ ਹੈ ਪਤਾ ਲੱਗ ਜੇ ਫਿਰ ਤਾਂ ਕੋਸ਼ਿਸ਼ ਹੀ ਬਾਦ ਦੇਵੇ ਮਨ ਨੂੰ ਬਣਾਉਣਾ ਆਪਣੇ ਆਪੇ ਕੋਸ਼ਿਸ਼ ਨਾਲ ਬਣਾਉਣਾ ਜਿਹੜਾ ਮਰਦੂ ਹੈ ਹਾਂ ਫਾਰਮੂਲਾ ਸਮਝ ਲਿਆ ਲਾਗੂ ਯਾਦ ਕਰਨਾ ਲਾਗੂ ਕਰਨਾ ਹੋਰ ਗੱਲ ਹੈ ਕਾਨੂੰਨ ਬਣਾਉਣਾ ਹੋਰ ਗੱਲ ਹੈ ਲਾਗੂ ਕਰਨਾ ਹੋਰ ਗੱਲ ਹੈ ਲਾਗੂ ਕਰਦੇ ਹੋ ਜਾਂਦਾ ਲਾਗੂ ਕਰਨਾ ਹੀ ਔਖਾ ਹੈ ਕਾਨੂੰਨ ਨੂੰ ਸੁਣ ਲੈਣਾ ਪੜ ਲੈਣਾ ਸਮਝ ਲੈਣਾ ਔਖੀ ਲਾਗੂ ਕਰਨਾ ਔਖਾ ਹੈ ਔਖੀ ਨਹੀਂ ਸ਼ਬਦ ਸਮਝ ਆਦਾ ਤਾਂ ਵੀ ਗੱਲ ਨਹੀਂ ਗੱਲ ਤਾਂ ਜੀਵਨ ਦੇ ਟੁਕੂਦਰ ਹੈ ਇਹ ਤਾਂ ਜੇ ਕੋਈ ਸ਼ਬਦ ਹੈ ਘੱਟ ਵੀ ਆ ਗਏ ਕੀ ਹੋ ਗਿਆ ਹੋਰ ਸ਼ਬਦ ਬਥੇਰੇ ਇੱਕੋ ਸ਼ਬਦ ਤਾਂ ਬਥੇਰੇ ਸ਼ਬਦ ਤਾਂ ਇੱਕੋ ਬਥੇਰਾ ਪੇਲਾ ਗੋਇ। ਪੇਲਾ ਗੋਇ। ਕਈ ਵਾਰੀ ਅਲੱਦਾ ਵੀ ਇਹ ਪੰਗਤੀ ਤਾਂ ਹੀ ਨਹੀਂ ਕੱਲ ਸਕਿਆ ਸੀ। ਕਿੱਡੀ ਹਾਂ। ਹਾਂ। ਅੱਜ ਕੱਲੀ ਪੰਗਤੀ ਕੇ। ਬੈਠੇ ਨਹੀਂ ਸੰਤ ਇਹ ਗੱਲਾਂ ਸੁਣਉਂਦੇ ਅੰਦਰ। ਜੋੜੀ ਹੋਈ ਆਪਣੇ ਯੁਧਿਸ਼ਤਰ ਨਾਲ ਕੇ ਜੇਤਾ। ਸਦਾ ਸੱਚ ਬੋਲੋ। ਨਾਲ ਨੇ ਲੱਭੀ ਕੱਲ ਨੂੰ ਯਾਰ ਕਰਕੇ ਆ ਗਿਆ। ਯੁਧਿਸ਼ਤਰ ਨੂੰ ਕਿਹਾ ਵੀ ਤੂੰ ਕਦੋਂ ਮੇਰੇ ਨਹੀਂ ਆਇਆ। ਉਹ ਦੂਹਰੇ ਦੂਹਰੇ ਪੜਾ ਪੜਛਣਾਤਾ ਉਹਦੇ ساری ਜ਼ਿੰਦਗੀ ਦਾ ਇਹ ਹੀ ਯਾਦ ਹੈ ਕਹਿੰਦਾ ਰਾਸ ਦੀ ਪੰਕਤੀ ਉਦੋਂ পড়ੂ ਜਦੋਂ ਯਾਰ ਹੋਊਗੀ ਅਸੀਂ ਰੋਜ਼ ਉਹ ਜੋੜੀ ਹੋਈ ਗੱਲ ਕਰਦਾ ਜੋੜੀ ਹੋਈ ਦਾ ਮਤਲਬ ਇਹ ਸੀਗਾ ਬਈ ਗਿਆਨ ਪੋਤਾ ਪੜ੍ਹਨ ਦੀ ਲੋੜ ਨਹੀਂ ਹੁੰਦੀ ਮੰਨਣ ਦੀ ਲੋੜ ਥੋੜਾ ਪੜ੍ਹ ਤੇ ਮੰਨਣ ਦੀ ਲੋੜ ਹਾਂ ਇਹ ਤਾਂ ਸਾਨੂੰ ਗਾਹਾਂ ਗੁੜਜਾਂ ਨਹੀਂ ਕਹੀ ਗਾਹਾਂ ਜਾਂ ਗੁੜਜਾਂ ਜਾਂ ਤੋਰ ਪੈਂਦਾ ਫਿਰ ਗਾਹਾਂ ਦੀ ਗੁੜਜਾਂ ਪੈਂਦੀਆਂ ਕਈ ਪੰਕਤੀਆਂ ਸਾਨੂੰ ਇਹ ਜਿਹੀ ਹੈ ਉਹਨਾਂ ਨੇ ਅਰਥ ਦੇ ਦਿੱਤੇ ਜਿਹੜੇ ਉਹ ਹੋਰ ਪਾਸੇ ਲਿਖੇ ਜਾਂਦੇ ਨੇ ਅਰਥ ਗੀਂ ਸ਼ੰਕਾ ਪਉਣੀ ਹੋਰ ਕੁਝ ਅਜਾ ਵਾ ਇਸੇ ਕੱਲ ਪਾਇਆ ਹੋਇਆ ਕੋਈ ਪੰਕਤੀ ਕੁਝ ਕਹਦੀ ਹੈ ਕੋਈ ਬੁੱਕਦੀ ਹੈ ਔਰਡਰ ਜੁਬਾਂਤਾ ਉਹ ਔਰਡਰ ਰੂਸ ਦਾ ਸਲੂਸ਼ਨ ਸਾਰੀ ਸੰਬੰਧ ਵਾਸਤੇ ਉਹ ਲੋਕਾਂ ਬਾਰੇ ਜਿਹੜੇ ਉਹ ਭਗਤੀਆਂ ਲੈ ਕੇ ਉਲਝਾਵਾ ਪਾ ਰਹੇ ਹਾਂ ਤਾਂ ਕਿ ਉਲਝਾਵਾ ਦੂਰ ਹੋਏ ਇਹਦੀ ਬੜੀ ਤਾਂ ਲੋਕੀ ਇਹ ਨੇ ਉਹ ਨੂੰ ਜਸਟੀਫਾਈ ਕਰਨ ਵਾਸਤੇ ਇਹਨਾਂ ਦਾ ਅਸਰ ਬਰਲ ਲੈਦੇ ਵੀ ਇਹ ਜਿਹਾ ਕਰ ਰਹੇ ਹਾਂ ਠੀਕ ਹੈ पे आप, आप, आप पे नाल घोस्ट आप अवदेश है आप आप पे सुगुण स्वरूप सेणी आप पे सुगुण स्वरूप है सुगुण स्वरूप स्याणी ता है जो सु काढ लग तो सु गुण बले निधि काढ तो बहुत गई तो बुद्धि दी सुगुण बहुत अद्भुत ਕਿ ਘੜੀਏ ਸੁੱਤ ਮਤਮਨ ਸਾਰੇ ਘੜੀਏ ਵਾੜੀ ਕੱਢ ਰਹੀ ਹੈ ਇਹਦੀ ਘਾੜ ਤੇ ਘੜੀ ਘੜ ਕੇ ਹੀ ਦਾ ਸਰਦਾਰ ਕੀ ਕੱਢ ਲੈ ਜੇ ਮਨ ਕੀ ਹੈ ਮੈਂ ਕੱਢਣਾ ਕੀ ਹੈ ਪਰਮ ਪਰਮ ਲਾ ਦੇਣ ਉਹ ਕੱਢਣਗੀ ਸਵਾਲੇ ਉਹ ਕੱਢਣਾ ਕੀ ਕੱਢਣਾ ਪਰਮ ਉਹ ਤੇਲੇ ਪਰ ਪਏ। ਰਾਮ ਕੀ ਹੈ ਇਹ ਉਲਟਾ ਮੰਨ ਲਿਆ। ਦਾਣ ਕੀ ਹੈ ਉਲਟਾ ਮੰਨ ਲਿਆ। ਪਾਪ ਨੂੰ ਮੰਨ ਲਿਆ। ਅਸਲੀ ਪਾਪ ਦਾ ਪਤਾ ਨਹੀਂ ਲੱਗਿਆ। ਆਪ ਹੈ। ਆਪ ਹੈ ਪਰ ਪਾਪ ਕੀ ਹੈ? ਜਿਹੜਾ ਅਸੀਂ ਪਾਪ ਬੋਲਦੇ ਉਹ ਪਾਪ ਨਹੀਂ ਹੈ। ਜਿਹੜਾ ਅਸੀਂ ਨਾਮ ਬੋਲਦੇ ਹਾਂ ਨਾਮ ਨਹੀਂ ਹੈ। ਜਿਹੜਾ ਅਸੀਂ ਜੱਪ ਬੋਲਦੇ ਹਾਂ ਨਹੀਂ ਹੈ। ਇਹ ਚੋਟ ਕਾਪ ਉਹ ਸੀ ਉਹਦੇ ਬਜਾਏ ਹੋਰ ਕੀ ਨੂੰ ਮੰਨ ਲੈ ਤੇ ਦੇਸ਼ਾ ਦਿੱਤਾ ਹੋਣਾ ਕੋਈ ਨਹੀਂ ਗੱਲ ਹੈ ਪਾਪ ਬੁਰਾ ਅੱਤੀ ਨੂੰ ਆਪ ਵੀ ਕੋਪਿਆ ਰੋਕੋ ਦਾ ਬਰੋਸ ਕਰ ਬੁਰਾ ਪਰ ਕਰਨ ਵਾਲੇ ਦਾ ਚੰਗਾ ਲੱਗਦਾ ਸਾਡੇ ਛਾਵਾਂ ਅੰਦਰੋਂ ਪਹਿਲਾਂ ਹੁੰਦੀ ਸਾਨੂੰ ਚੰਗੀਆਂ ਲੱਗਦੀਆਂ ਨੇ ਵੜੀ ਲੱਗਦੀ ਹੈ ਅੱਛਾ ਲੱਗਦੀ ਬੜੀ ਸਾਨੂੰ ਰੁਕਣ ਵਾਲਾ ਵਾਰਾ ਲੱਗਦਾ ਕਿਹੜਾ ਰੋਗ इच्छामा निरोग बंद करके और कुछ पाप पड़ और ओ पाप ते टेक्सलाता धीरे बनाया तो हम तुनु गलली पंडित ने जो पाप कड़ेया ओदा टेक्सलाता तो मैं मुक्ति भी तरह दूनु देई जो कोई रब दी लोड नहीं उचाड़े हैंगा बस इत्ते होजूगा हो पहला दा सारा धर्म बदलया फिर धर्म बदल लक भी ले लेया ले। ਉਹ ਤਾਂ ਕਮਿਸ਼ਨ ਵੇਚ ਤਾ ਰੁਕ ਰਿਆ ਤਾਂ ਬਲਡਿੰਗ ਹੈ ਕਿ ਨਹੀਂ ਇਹਦਾ ਬੰਦ ਉਹ ਨੋ ਇੰਗਲਿਸ਼ ਬਰ ਲਿਆ ਸੀ ਨੋ ਇੰਗਲਿਸ਼ ساری ਗੱਲ ਕੀਤੀ ਸੀ ਤੁਹਾਨੂੰ ਚਾਹੇ ਕੀਤਾ ਉਹਦੇ ਕੀਤਾ ਗਹਿराई ਤੋਂ ਨਹੀਂ ਵੀ ਜੜ ਕਿਥੋਂ ਪੈਦਾ ਹੋਈ ਵਧੀਆ ਪਹਿਲਾਂ ਤਾਂ ਬੇਸ ਬਦਲੀਆ। ਇਹ ਤਾਂ ਬੇਸ ਬਦਲਿਆ। ਫਿਰ ਉਹ ਬੇਸ ਨੂੰ ਐ ਫਿਰ ਬੇਸ ਤੋਂ ਕੋਈ ਗੱਲ ਨਹੀਂ ਸਾਰਿਆਂ ਤੋਂ ਕਮਾਈ ਹੁੰਦੀ ਐ। ਕਿ ਦੇਵ ਗਰੂਨ ਪੁਲਿਸ ਨੂੰ ਕਮਾਈ ਕਰਦੇ ਨੇ ਉਹ। ਜਿਹਦੀ ਉਹਨਾਂ ਦੀ। ਇਹ ਉਹ ਲੋ ਜਿਹਦੇ ਜਮਾਨ ਤੋਂ ਹੋ ਜਾਂਦੀ ਹੈ ਉਹਦੇ ਨਹੀਂ ਨਹੀਂ ਸਕਦੀ ਉਹ ਜਿਹਦੇ ਜਮਾਨ ਤੇ ਰਹਿੰਦੀ ਉਹ ਕੇ ਰੱਖਿਆ ਮਨਸਾ ਪਾਪ ਬੇਦ ਵਿੱਚ ਹੋਇਆ ਸੀ ਮੰਦੀ ਇੱਛਾ ਹੀ ਪਾਪ ਹੈ ਮਨਸਾ ਪਾਪ ਹੋਣਾ ਮਨ ਦੇ ਵਿੱਚ ਇੱਛਾ ਪੈਦਾ बणियो ये वे दे ओ छड़ती राजी ना वोंसा पाप दी देया या की के इच्छा हुई पाप गया इच्छा पैदा हुई थी मैं दा बुरा करना कीता है नहीं, नहीं पाप का हो दलील इरादा कतल ਆਪਣੇ ਵਿੱਚ ਜਾਂਦਾ ਜੀ ਇਰਾਦਾ ਸੀ ਕਤਲ ਦਾ ਕਤਲ ਹੋਇਆ ਇਹ ਇੱਥੇ ਤਾਂ ਚਲਦਾ ਹੈ ਉਹਨਾਂ ਨੇ ਤਾਂ ਛੱਡਤਾ ਉਹਰੇ ਤਾਂ ਫਿਰਦੀ ਹੈ ਇਰਾਦਾ ਕਤਲ ਹੈ ਆਪ ਸੋਚ ਸੋਚ ਕਰੀਏ ਸੋਚ ਨਹੀਂ ਜੀ ਹਾਂ ਜੀ ਇਰਾਦਾ ਕਤਲ ਸਾਡੇ ਪਲੈਨਿੰਗ ਕਰਦੇ ਵੀ ਫੜੇ ਜਾਂਦੇ ਨੇ ਤਾਂ ਕਹਿੰਦੀ ਸੀ ਕੀ ਪਤਾ ਪਲੈਨਿੰਗ ਤੇ ਬਾਅਦ ਸਰੇ ਚਾੜੀ ਸੀ ਕਿ ਨਹੀਂ ਚੜੀ ਸੀ ਪਰ ਤੇ ਸਾਡੇ ਰੱਖਿਆ ਹੋਇਆ ਪਲੈਨਿੰਗ ਬਣਾ ਲਈ ਸੀ ਤੈਨ ਦੱਸਿਆ ਕਿ ਉਹਨੇ ਲੱਗੀ ਤੂੰ ਕਿਉਂ ਨਹੀਂ ਦੱਸੀ ਜੇ ਤੂੰ ਦੱਸ ਦਤ ਸੀ ਉਹ ਗਾਂ ਬਿਦੂ ਦੀ ਪਤਾ ਸੀ ਵੀ ਉਹਨੇ ਪਲੰਦ ਸਰੇ ਚਾੜ੍ਹ ਦਿੱਤੀ ਚਾੜ੍ਹ ਦਿੱਤੀ। ਬਸ ਚਾੜ੍ਹਦਾ ਦਿੱਤੀ। ਪੁੱਟ-ਪੁੱਟ ਕਰ ਤੋਂ ਸੋਤ। ਤੁਮੀ ਉਹਨੇ ਨਹੀਂ ਦੋਸੀ। ਤੋਂ ਅਸੀਂ ਬਣਦਾ ਨਹੀਂ ਸੀ ਮੈਂ ਸੀ। ਬਣਦਾ ਸੀ। ਬੇਟਾ ਨਾ ਕਰਿਓ ਭਾਜੀ। ਇਹ ਦੀ ਸੀ। ਕਹਿੰਦੇ ਪ੍ਰੋਮੋਸ਼ਨ ਕਰੀ ਤੇ ਤੇਰੀ ਡਿਊਟੀ ਤੇ ਤੱਕੜਾ ਕਰਾ ਪਾ। ਭੱਗੇ ਕੋਈ ਮਨਿਸਟਰੇ ਦੀ ਗੱਲ ਕਹੇ ਤਾਂ ਉਹਦੇ ਵਾਸਤੇ ਨਹੀਂ ਸੀ। ਆ ਉਹਦੇ ਵਾਸਤੇ। ਬਸ ਵੇਖੇ ਆਪੇ। ਆਪੇ। ਆਪੇ ਸਭ ਕਾ ਆਪਣਾ ਚੋਇਸ ਕਰ ਵੇਖੇ ਆਪੇ। ਚੋਇਤ ਆਪਣੀ ਕਰਕੇ ਆਪੇ ਵੇਖ ਆਪੇ ਸਭ ਨਾਲ ਜੀਆਂ ਕਹੇ ਜਾਂਦੇ ਇੱਥੇ ਜੀਤ ਉਹ ਅੱਡ ਆਪੇ ਸਭ ਨਾਲ ਜੀਆਂ ਕਹੇ ਜਾਂਦੇ ਅੰਦਰਲੇ ਦੀ ਗੱਲ ਹੈ ਸਭ ਦੇ ਜੀਵ ਦਾ ਅੰਦਰਲਾ ਬਾਹਰਲਾ ਜੜ ਨੂੰ ਹਰੇਕ ਦਾ ਅੰਦਰਲਾ ਬਾਹਰਲਾ ਜੜ ਨੂੰ ਅੰਦਰਲੇ ਨੂੰ ਇੱਕ ਬੰਦੇ ਉਹਦਾ ਸੁਭਾਅ ਦੇਖੋ ਚਾਰ ਗੁਣ ਕਾਇਮ ਲਿਖਿਆ ਆ ਤੇ ਤਾਂ ਫਿਰ ਸਾਰੇ ਤੇ ਪੈ ਗਿਆ। ਹਾਂ। ਅਗੋਂ ਇਹ ਭਾਵੇਂ ਤੰਦਰੁਸਤ ਹੀ ਹੋਊਗਾ ਇਹ ਦੂਜਾ ਸਰੀਰ। ਅੱਧਾ ਸਰੀਰ ਤੰਦਰੁਸਤ ਅੱਧੇ ਨੂੰ ਕੀ ਕਰਾਂਗੇ? ਸਰੀਰ ਤੰਦਰੁਸਤ ਨਹੀਂ ਬਣਿਆ ਜਾਣਾ ਜੇ ਇੱਕ ਪਾਸਾ ਵੀ ਮਾਰਿਆ ਗਿਆ। ਅੱਧੇ ਪਾਸੇ ਨੂੰ ਲਕਵਾ ਮਾਰ ਗਿਆ। ਸਰੀਰ ਤੇ ਇਫੈਕਟਵ ਹੋ ਗਿਆ ਨਾ ਮਨੂਅਲ ਇਫੈਕਟ ਪਿਆ ਆਇਆ ਹੈ। ਚਾਹੇ ਪਰ ਇੱਕ ਪਾਸਾ ਤੰਦਰੁਸਤ ਹੈ ਉਹਦੀ ਤੰਦਰੁਸਤੀ ਕੋਈ ਨਹੀਂ ਫਰਕ ਹੈ। ਇਸ ਕਰਕੇ ਉਹਨੂੰ ਉਹੜੇ ਤੰਦਰੁਸਤਾਰੇ ਖਾਤੇ ਉਹ ਸੱਚ ਤੇ ਕਹਿ ਰਿਹਾ। ਇਹ ਤੇ ਕਹਿ ਰਿਹਾ। ਇਸ ਕਰਕੇ ਉਹ ਜਿਹੜਾ ਜਾਨੀ ਹੈ ਆਪੇ ਸਭਣਾ ਉਹ ਜੀ ਨੂੰ ਦੇਖਦਾ ਜਾਣਦਾ ਜਿਹੜਾ ਬਿਨ ਬੋਲੇ ਜਾਣਦਾ ਕੌਣ ਜਾਣਦਾ ਅੰਦਰ ਜਾਣਦਾ ਆਪਣੇ ਅੰਦਰ ਬੈਠਾ ਉੱਥੇ ਨਾਲ ਰਿਕਾਰਡਿੰਗ ਕਰਕੇ ਦਰਸਾਣਗੇ ਜੇ ਇਨਫੋਰਮੇਸ਼ਨ ਲਈ ਕੋਈ ਦੇਖੋ ਕੈਮਰਾ ਲੱਗਾ ਹੈ ਤੇ ਗਾਹਾਂ ਟੀਵੀ ਦੇ ਤੇ ਉਹਦੀ ਬਾਅਦ ਜਾਰੀ ਹੋ ਬੋਲੋ ਉਹਦੇ ਜਰੀਏ ਅਸੀਂ ਇੱਥੇ ਟੀਵੀ ਦੇ ਹਾਂ ਜੋ ਟੂਬੇ ਭੇਜ ਰਿਹਾ ਹੈ ਇਹ ਇਨਫਰਮੇਸ਼ਨ ਪਿੱਛੇ ਭੇਜ ਰਿਹਾ ਜੀ ਸਰਬਤ ਜੋ ਇਹਦਾ ਰੈਜ਼ੀਡੈਂਟ ਇਨਫਰਮੇਸ਼ਨ ਹੋਈ ਚੱਕੀ ਅਜੀ ਕੈਮਰਾ ਲਾ ਦਦੇ ਉਹ ਲੋਕ ਲਾਉਂਦੇ ਜੋ ਕਰਦੇ ਨੇ ਰੋਵਰ ਸਾਡੇ ਕੈਮਰਾ ਲਾ ਹੈ ਤੇ ਉਹਦਾ ਕੈਮਰਾ ਇਹਦੇ ਵੀਡੀਓ ਦੀ ਜਨ ਹੁੰਦਾ ਪਿੱਛੇ ਵੀ ਜੁੜਿਆ ਹੈ ਨਾ ਉਹ ਇੱਧਰ ਵੀ ਜੁੜਿਆ ਹੈ ਉਹ ਵੈਸੇ ਤੇ ਦਰੂ ਸਾਰਾ ਉੱਥੇ ਦੀ ਜਾਣਕਾਰੀ ਪਿੱਛੇ ਵੀ ਜਾਈ ਹੁੰਦੀ ਉਹਦੇ ਲਈ ਜਾਣਕਾਰੀ ਇੱਧਰ ਆਈ ਜਾਂਦੀ ਇੱਧਰ ਲਈ ਜਾਣਕਾਰੀ ਦੀ ਲੋਡ ਉੱਧਰ ਜਾਦਾ ਜਾਂਦੀ ਉਹਦੀ ਜਾਣਕਾਰੀ ਤਾਂ ਕਦੇ ਕਦੇ ਆਉਂਦੀ ਹੈ ਤੂੰ ਜਾਣਾ ਤਾਂ ਐਸੇ ਤੋਂ ਖਤਰਾ ਹੈ ਇਹਦੀ ਜਾਣਕਾਰੀ ਦੀ ਲੋਡ ਹੈ ਮੇਰੇ ਕੀ ਕਰ ਰਿਹਾ Thank <laughs> you.